ਆਦਿ ਗੁਰ ਆਦਿ ਗੁਰ ਇਹ ਨਵਾਂ ਜੀ ਗੁਰੇ ਦੀ ਕਿ ਗੁਰੇ ਗੁਰ ਇਹ ਅਲੱਗ-ਅਲੱਗ ਇਹਦਾ ਮਤਲਬ ਗੁਰੂ ਆਦਿ ਗੁਰ ਦੇਵ ਦੂ ਗੁਰੂ ਆਦਿ ਗੁਰ ਕ ਆਦਿ ਗੁਰ ਇਹ ਅਲੱਗ ਪੜਨਾ ਜੀ ਇਹ ਇਹ ਦੂ ਲਗਤੀ ਪੜੀ ਜਾਂਦਾ ਹਾਂ ਹਾਂ ਆਰਕਾ ਹੈ ਹੂੰ ਗੁਰੂ ਨਾਨਕ ਦਾ ਹਾਂ ਆਦਿ ਗੁਰ ਦੇਵ ਆਦਿ ਗੁਰ ਦੇਵ ਕਿ ਉਹ ਅਸਲ ਦੇ ਵਿੱਚ ਜਿਹੜੀ ਵੀ ਪਹਿਲਾਂ ਸ਼ੁਰੂ ਹੁੰਦੀ ਹੈ ਗੱਲ ਪਹਿਲਾਂ ਗਿਆਨ ਸ਼ੁਰੂ ਹੁੰਦਾ ਅੰਦਰੋਂ ਸ਼ੁਰੂ ਹੁੰਦਾ ਜਿਹੜਾ ਗੁਰਦੇਵ ਹੁੰਦਾ ਪਰ ਪਤਾ ਮੁਜ਼ਾਇਦ ਕੋਈ ਨਾ ਕੋਈ ਹਰ ਸਤੇ ਤੁਹ ਮੇਰਾ ਪਤਾ ਤੁਹਾੰਦਰਾ ਮਾਤਾ ਕਿਹ ਹੈ ਉਹ ਸਰੂਪਾ ਮਾਤਾ ਕਾ ਉਹ ਸਰੂਪ ਰੇਤੇ ਹੈ ਇਹ ਤਾਂ ਉਹ ਦੇਖੋ ਗਰਭ ਦਿੱਤ ਕੌਣ ਨਵੇਂ ਕਿਰੂ ਨਵੇਂ ਬਾਹਰ ਬੁੱਢੇ ਆ ਆ ਆ ਇਹ ਵੀ ਆਦ ਸ੍ਰਿ ਸਿਰ ਆਦ ਹੈ ਜੇ ਇਹ ਸੀ ਜਿਹਾਂ ਚ ਸੀਕਵੈਂਸ क्योंकि ਗੱਲ ਲਾ ਗੁਰੇ ਹਾਂ ਕਿਉਂਕਿ ਉਹਦੇ ਨਾਲ ਆਨਦੀ ਲੱਗਿਆ ਲੱਭੇ ਹਾਂ ਉਹ ਤੋਂ ਬਾਅਦ ਹੈ ਇਹ ਆਗ ਲੱਗੇ ਨਾਲ ਉਹ ਇਹ ਜਿਹੜਾ ਆਦ ਹੈ ਸ੍ਰਿ ਸਿਰ ਆਦ ਹੈ ਅਜਾ ਰਚਨਾ ਦਾ ਰਚਨਾ ਦਾ ਹੈ ਆ ਰਚਨਾ ਦਾ ਇਹ ਦੇਖੋ ਜਿਹੜੀ ਚੀਜ਼ ਦਾ ਆਦ ਹੈ ਉਹ ਦਾੰਤ ਵੀ ਹੈ ਇਹ ਗੱਲਾਂ ਐ ਸਮਝਣ ਵਾਲੀਆਂ ਨੇ ਕੋਈ ਬਹੁਤ ਕੋ ਸੁੱਝਿਆ ਹੋਇਆ ਆਦਮੰਦ ਵੀ ਲੱਗੂਗਾ ਆਦਮਦ ਆਦਤ ਅਕਸਰ ਇਹੀ ਇਹੀ ਗੋ ਬੰਨ ਲਿਖ ਦਿੱਤਾ ਹੈ ਇਸੇ ਰਸੂਲਾ ਕੋਚਾ ਅਸੂਲ ਨੇ ਆਪਣਾ ਬਚਾ ਕੋ ਵਰਵਾਨੀ ਲਿਖੀ ਜਈਏ ਹੁਣ ਆਪਾਂ ਨੂੰ ਸਮਝਣਾ ਨਹੀਂ ਵੀ ਵਰਵਾਨੀ ਆਏ ਕਿਉਂ ਆਈਏ ਇਹ ਇਹ ਗੁਰ ਨਾਲ ਲਗਿਆ ਆ ਜਣੀ ਕਿ ਇਹਦਾ ਅੰਤ ਹੈ ਫਿਰ ਨਾਲ ਲਗਿਆ ਗੁਰ ਆਧਾ ਕਿਹਦਾ ਆਦਾ ਗੁਰ ਗੁਰ ਆਧਾ ਕਿਹਦਾ ਆਦਾ ਹੈ ਜਿਸੇ ਹੋਰ ਦਾ ਆਦਾ ਹੋਰ ਵਾਟਕ ਲੱਗਿਆ ਉਹਦੇ ਨਾਲ ਤਾਂ ਉਹ ਤਾਂ ਹੋਰ ਦਾ ਜਿਹਦੇ ਹੋਰ ਦਾ ਸਾਢਾ ਹਾਂ ਇਹਦਾ ਕੋਣ ਹੈ ਇਹਦਾ ਇਹਦਾ ਕੋਣ ਹੈ ਉਹ ਆ ਰਿਹਾ ਸਾਥ ਵਾਲੋ ਕਿਹਦਾ ਆ ਰਿਹਾ ਅੱਜ ਕਿਹਦਾ ਆ ਰਿਹਾ ਇਹਦੇ ਹੋਰ ਦਾ ਅਧ ਹਾਂ ਆਦ ਗੁਰੇਵਨ ਲੱਗਿਆ ਹੋਇਆ ਉਹਦਾ ਅਧੀਆਂ ਕੋਈ ਉਹ ਅਨادیه जो hmm. hmm. तो है है क्या जोत कहिए ना जोत अनादि है मेरा ब्रह्म है ब्रह्म चाहे तो ब्रह्म हूं hmm. ब्रह्म नहीं बोल ब्रह्म बनना छोटे छोटे ने बड़ा बनना hmm. ਨਵਾਰਗੇ ਦੇ ਵਾਲੇ ਪਾਣੋ ਉਹ ਸਵਾਲ ਖੜਾ ਹੋ ਗਿਆ ਮੁਕਤ ਜੋਰ ਨਹੀਂ ਮਜੂਰ ਬਣਨਾ ਉਹ ਤਾਂ ਕੋਈ ਗੱਲ ਹੈ ਕਿ ਕਦੋਂ ਤੋਂ ਅਨਾਦੀ ਦਾ ਹੈ ਹੂੰ ਉਹ ਅਨਾਦੀ ਨਹੀਂ ਹੈ ਹੋਕਮ ਅਨਾਦੀ ਨਹੀਂ ਹੈ ਹੋਕਮ ਹੋਕਮ ਹੋਇਆ ਇਹਦਾਂ ਚਾਹੇ ਹੁਕਮ ਨੂੰ ਸਭ ਰੱਖ ਕਿਹਾ ਹੋਇਆ ਕਿਉਂਕਿ ਜੋਤ ਵਿੱਚ ਸਭ ਰੱਖ ਹੁਕਮ ਹੀ ਜੋਤ ਵਿੱਚ ਜੋ ਕੋਈ ਸ਼ਕਤੀ ਹੈ ਸ਼ਕਤੀ ਹੈ ਤੇ ਸ਼ਬਦ ਦੀ ਸ਼ਕਤੀ ਹੈ ਤੇ ਉਹਦੀ ਇੱਛਾ ਦੀ ਸ਼ਕਤੀ ਹੈ ਸ਼ਬਦ ਦੀ ਹੁਕਮ ਉਹਨੂੰ ਵਿੱਚ ਇੱਛਾ ਤੋਂ ਬਾਦ ਹੁਕਮ ਇੱਛਾ ਜੋ ਪ੍ਰਗਟ ਹੁੰਦੀ ਉਹ ਸਾਨੂੰ ਹੁਕਮ ਕਹਿੰਦੇ ਨੇ ਪਰਗਟ ਹੋ ਗਏ ਉਹ ਤਾਂ ਉਹ ਇੱਛਾ ਨੂੰ ਹੁਕਮ ਕਹਿਨੇ ਨੇ ਉਹਦਾ ਪਾਣਾ ਉਹਦੀ ਇੱਛਾ ਰੂ ਦਾ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਛਾ ਨੂੰ ਪ੍ਰਗਟ ਕਰ ਜਾਣਾ ਕਰਾਂਗੇ ਇੱਛਾ ਰੂਪ ਤਾਂ ਇੱਛਾ ਦੇ ਪ੍ਰਗਟ ਕਰਦੇ ਸ਼ਬਦਾਂ ਦਾ ਪ੍ਰਗਟ ਕਰਦੇ ਅੰਦਰ ਸਾਡੇ ਪ੍ਰਗਟ ਹੋ ਗਏ ਅੰਦਰ ਪ੍ਰਗਟ ਹੈ ਜੀਦੇ ਅਸਰ ਬਾਰੇ ਤਾਂ ਉਸ ਨੂੰ ਪਤਾ ਪਿੱਛਾ ਦਾ ਤਾਂ ਇਹ ਨੂੰ ਵੈਲਨ ਗੁਪਤੀ ਬਾਣੀ ਜਿਹੜੀ ਗੁਪਤੀ ਬਾਣੀ ਤੁਰਕੀ ਬਾਣੀ ਹੈ ਇੱਛਾ ਹੀ ਹੈ ਠੀਕ ਹਾਂ ਹਾਂ ਇਹੀ ਹੈ ਹੋਰ ਕੋਈ ਤੁਰਕੀ ਬਾਣੀ ਨਹੀਂ ਹੈਗੀ ਤੇ ਚੋਛਾ ਬੈਦਾ ਹੋਇਆ ਜੇ ਅੱਖਾਂ ਨਹੀਂ ਦੇਖਦੇ ਬਾਹਰੋਂ ਪੈਦਾ ਹੋਵੇ ਤਾਂ ਮਾਇਆ ਦੀ ਚਾਹ ਪੈਦਾ ਹੋਊਗੀ ਉਹ ਬੜੀ ਉਹ ਇਹ ਅੰਦਰੋਂ ਪੈਦਾ ਹੋਈ ਤਾਂ ਨਹੀਂ ਜਿਸ ਉਹ ਇੱਛਾ ਸੱਚ ਦੀ ਹੈ ਸੱਚਾ ਨਾਮ ਕੀ ਲੱਗੂ ਇੱਕ ਤਾਂ ਦੀ ਭੁੱਖ ਦੀ ਆਤਮਾ ਦੀ ਲੋੜ ਦੀ ਜਿਹੜੀ ਹੈ ਇੱਛਾ ਇਹ ਇੱਛਾ ਜਿਹੜੀ ਤਾਂ ਬਾਹਰ ਦੀ ਇੱਛਾ ਪੈਦਾ ਉਹ ਤਾਂ ਤਰਫ ਉੱਤੇ ਹੋਈ ਨਹੀਂ ਸਕਦੀ ਕਿਉਂਕਿ ਇੱਥੋਂ ਉੱਪਰ ਉੱਪਰ ਅੱਖਾਂ ਵੀ ਕਰੂਗੀ ਇਹ ਚੀਜ਼ਾਂ ਦਾ ਵੀ ਇਹ ਤੇ ਉਹ ਵੀ ਇੱਥੇ ਸਾਰੇ ਦਾ ਸੱਚੀ ਠੀਕ ਇਹ ਤਾਂ ਇਹਦਾ ਰੁਕੂ ਮੈਂ ਦੇਖੇ ਉਹ ਜਿਹੜੀਆਂ ਆਸਾਂ ਦੇਖ ਕੇ ਹੀ ਛਪੈ ਤਾਂ ਹੋ ਗਈ ਉਹ ਤਾਂ ਹੋ ਗਈ ਨਾ ਜਿਹ ਵਿੱਚ ਉਹ ਇੱਛਾ ਤਾਂ ਜਿੰਨਾ ਚਿਰ ਹੈਗੀ ਸੰਸਾਰ ਚ ਰਹੂ ਸੰਸਾਰ ਦੇ ਵਿੱਚ ਰੁਚੀ ਹੈ ਉਹਦੀ ਸੰਸਾਰ ਦੇ ਸੰਸਾਰ ਸੰਤਿਖ ਇੱਛਾ ਹੈ ਬਚਾ ਉਹ ਵੀ ਰਹਿਣੀ ਵੀ ਰਹਿਣੀ ਵੀ ਹੈ ਜੇ ਨਾਮ ਦੀ ਇੱਛਾ ਸੱਚੀ ਇੱਛਾ ਉਹ ਬਾਸਪਤਾ ਦੇ ਗੂੜੇ ਰੁਕ ਉਹ ਪਹਿਲਾਂ ਤੋਂ ਰੋਣੇ ਪਤਾ ਲਗਾ ਉਹਦਾ ਦੱਸਤਾ ਤਾਂ ਰੋਣੇ ਪਤਾ ਦਰੂਛਾ ਗਾਦੀ ਹੈ ਦਾਦਾ ਕਹਿਣ ਵੀ ਦੱਸਿਆ ਵੀ ਤੈਨੂੰ ਗਿਆਨ ਚਾਹੀਦਾ ਉਹ ਟੋਲਦਾ ਫਿਰਦਾ ਵਾ ਦੱਸਤਾ ਹੈ ਟੋਲਦਾ ਹੀ ਜਦ ਫਿਰਦਾ ਵਾਂਟੀ ਕਰਦਾ ਫਿਰਦਾ ਟੋਲਦਾ ਫਿਰਦਾ ਬਰਬਦਾ ਦੀ ਬਨਿਆ ਦੀ ਵਿਚਾਰ ਚਾ ਕਰਾਂ ਕਰਾਂ ਚਾਹਤਾਂ ਕਿਹਦੇ ਨੂੰ ਕਰੇ ਉਹਦਾ ਪੱਥਰਿਆਂ ਮੂਲਿਆਂ ਬਣ ਜਾਂਦੀ ਜਿਹਦੇ ਬਲ ਜੱਗਦਾ ਉਹ ਤਾਂ ਉਹਨੂੰ ਦੇਖਦੇ ਹੀ ਰਾਂਗ ਹੋ ਜਾਂਦੇ ਨੇ ਹੁਣ ਉਹਦੇ ਨਾਲ ਜਾਂਦਾ ਕੀ ਕਰੇ ਉਹ ਉਹਦੇ ਨਾਲ ਦੇਖਦੇ ਹੀ ਰਹਿ ਜਾਂਦੇ ਨੇ ਦੇਖਦੇ ਹੀ ਰਹਿ ਜਾਂਦੇ ਨੇ ਤਾਂ ਫਿਰ ਜਦ ਚੱਪਚਾ ਵਾਲਾ ਕੋਈ ਨਾ ਮਿਲਿਆ ਤਾਂ ਫਿਰ ਇੱਛਾ ਹੋਵੇ ਹਾਂ ਹੋਵੇ ਬੰਦਾ ਹੋਵੇ ਨਾ ਫਿਰ ਆਗਾਸ ਭੁੱਖ ਹੋ ਸਵਾਲ ਤਾਂ ਕੋ ਖੜੀ ਹੈ ਸੱਚੇ ਨਾਮ ਕੀ ਲੱਗਾ ਭੁੱਖ ਜੇ ਲੱਗੇ ਭੁੱਖ ਤੇ ਬਿਨ ਦਾਤਾ ਕਦਾ ਆਹ ਬਖਰ ਦੋ ਜੇ ਦੱਤੇ ਵਾਲਾ ਗੁਣ ਕੱਟੇ ਤੇ ਦਾਤਾ ਜੀ ਹੈ ਉਹ ਦਾਦਾਏ ਕੋਲ ਤੇ ਝੰਕਾ ਜਲੀ ਕੋਈ ਨਹੀਂ ਕਹ ਦੂਗਾ ਬੜੇ ਬੜੇ ਦੁਆਰਦਾਰਾ ਵੀ ਬੈਠੇ ਨੇ ਇਹ ਪੋਜੀਸ਼ਨ ਵਾਲੇ ਰੱਬ ਨੂੰ ਆਣਾ ਅਹੇ ਜੇ ਪਾਗਲ ਦੀ ਹਰਜਾਇ ਤੇ ਰੱਬ ਨੂੰ ਮੰਨਣ ਵਾਲੇ ਜ਼ਿਆਦਾ ਪਾਗਲ ਨੇ ਨਾ ਅਮਨਰ ਵਾਲੇ ਪਾਗਲ ਨਹੀਂ ਹੂ ਬਹੁਤ ਇਤਮਾਦ ਨੇ ਬੜੇ ਚੈ ਇਤਮਾਦ ਨੇ ਰੱਬ ਰੂਪ ਨੂੰ ਵਿਸ਼ਵਾਸ ਦੇ ਹੋ ਉਹ ਕੰਮ ਕਰ ਜੇ ਭੁੱਖਾ ਬੈਠਾ ਉਹਦੇ ਰਾਜ ਚ ਕੋਈ ਰਾਜ ਤਾਂ ਹੀ ਚੰਦਾ ਰਾਜਾ ਵੀ ਕਾਦਰ ਹੋ ਰਾਜੇ ਹੋਂਦ ਤੇ ਵੀ ਸਵਾਲ ਖੜਾ ਹੋਈ ਉਹਦੇ ਰਾਜ ਤੇ ਵੀ ਸਵਾਲ ਖੜਾ ਹੋ ਗਿਆ ਅੱਜ ਤੇ ਲੋੜ ਤੇ ਚਲ ਨੂੰ ਮੈਂ ਆਪ ਗੋੜੀ ਚੈ ਨਹੀਂ ਦੋਸੋ ਸ਼ਾਇਦ ਉਹਦਾ ਸਹਿ ਸਹਿ ਸਹਿ ਨਹੀਂ ਦੋਸੋ ਸਹਿ ਆਉਂ ਕੰਤਾ ਮੇਰੇ ਅੱਗੇ ਬੁੱਖ ਦਾ ਮੈਨੂੰ ਨਹੀਂ ਸੀ ਉਹਦਾ ਖੜਾ ਦੋਸ ਦੇਖੋ ਸਿਰਕ ਪੜਦਾ ਹੋ ਚੁੱਕਿਆ ਇਹਦਾ ਅੱਛਾ ਦਾ ਆਖਰੀ ਪੜਦੇ ਚਾਹ ਗੁੰਦੇ ਨੇ ਹੁਣ ਉੱਥੋਂ ਆ ਕੇ ਇਹ ਬੋਤਲੀ ਤੇ ਹੋ ਗਈ। ਬੋਤਲੀਆਂ ਪਰ ਉਹ ਤਾਂ ਕਿੱਥੇ ਗਈਆਂ। ਹੂੰ। ਦੀਵਦਗਾ ਚੋਰੀਆਂ। ਅੱਜ ਚੇਲੋੜ ਉਹਨੇ। ਹੂੰ। ਆਗੜਨੀ ਕਹਿੰਦੇ ਸਾਡੇ ਚ ਸੀ। ਮੈਨੂੰ ਭੁੱਖ ਨਹੀਂ ਜਾਂਦੀ ਨਾਮ ਦੀ। ਉਹਦਾ ਕੀ ਲੋਸਾ ਪਰ ਤੋ ਸਾਡੇ ਹੀ ਵਰਸਦਾ ਪੁੱਜੇ-ਪੁੱਜਾੜੋ ਤਾਂ ਸਾਡੇ ਹੀ ਵਰਸਦਾ ਤਾਂ ਪਰਤ। ਹੂੰ। ਤੋ ਬੜਿਆ। ਤੈਹੀਂ ਝੌਂਪੜੀ ਬਣਾ ਲਈ ਸੀ ਸੁਬੀਰ ਕੋ। ਅੱਜ ਦੋਵੇ ਤੂੰ ਹੀ ਬੈਠਾ ਸੀ ਅੱਦਰ ਉਹਦਾ ਬਰਸਦਾ ਹਾਂ ਬਰਸਦਾ ਹੀ ਬਰਸਦਾ ਬੁੱਝਾ ਕੀ ਲੋੜ ਸੀ ਇਹ ਲੱਗ ਹੁੰਦੀ ਇਹ ਲੱਗ ਹੁੰਦੀ ਤਾਂ ਰੋਟੀ ਉਹ ਜਾਮ ਲੱਗਦੇ ਨੇ ਵੀ ਕਿਤੇ ਅਮਰ ਤਾਂ ਸਦਾ ਬਰਸਦਾ ਹੀ ਹੋਵੇ ਦਾਤਾ ਅਮਰ ਤਾਂ ਬਰਸਦਾ ਜਦੋਂ ਬਾਗ ਬਾਕਸ਼ ਹੁੰਦੀ ਆ ਜਾਂਦਾ ਅੱਖਾਂ ਜਾਈਆਂ ਕੱਢ ਜਾਈਂ ਜਾਂ ਫਿਰ ਆਪੇ ਝੋਕੇ ਫਿਰ ਪਿੱਛੇ ਜਾਂਦਾ ਫਿਰ ਤਾਂ ਕੋਈ ਤਾਂ ਲੱਗ ਹੀ ਜਾਂਦਾ ਇਹ ਤਾਂ ਨਾ ਖੜਾ ਬੈਠਾ ਅੱਖਾਂ ਦੇ ਨਹੀਂ ਹਣ ਪਤਾ ਨਹੀਂ ਬਾਰ ਬਾਰ ਸ਼ਾਇਦ ਫਿਰ ਉਹ ਸੁਣ ਡਗੜ ਡਗੜ ਜਾ ਵੀ ਪੈਣਾ ਕਹਿੰਦਾ ਬਾਹਰ ਨਹੀਂ ਪੈਣ ਲੱਗੇ ਆਪਾਂ ਕਹਿੰਦੇ ਦੇਖਿਆ ਤਾਂ ਹੈ ਨਹੀਂ ਸੁਣੇ ਕਹਿੰਦਾ ਵਾਕੀ ਉੱਤੇ ਹਾਂ ਯਾ ਵਈ ਦੇਖ ਲਵੇ ਜੇ ਤੇ ਅੰਨ ਬੋਲੇ ਨੇ ਅਪਰ ਦਸਾਹੀ ਬਸਦਾ ਨੂੰ ਦੀਦਾਰ ਸੁਣਦਾ ਮਰਫੇ ਕਥਾਕਾਰ ਲੱਗਿਆ ਕਿੰਨਾ ਬੋਲੇ ਕਿਹਾ ਮੈਂ ਅੰਦੇ ਇਹਨਾਂ ਆਖੀਆਂ ਜਿੰਨੂ ਜਲੇ ਕੋਟਰ ਲੋਇਲ ਮੈਂ ਆਇਆ ਖਾਂ ਚਾਹੇ ਹੁਣ ਇਹਨਾਂ ਨਾਲ ਦੀਦਾਰ ਜੀ ਦੋ ਵਰਸਦਾ ਸਮਝਦਾ ਸਤੇ ਸੇ ਨਾਨਕਾ ਜੋ ਖਸੋ ਸੁਛੇ ਲਿਆ ਪਕਸ ਦਾ ਸਾਹਮਣੇ ਤੈਨੂੰ ਦੀਦਾ ਨਹੀਂ ਆ ਸਮੁੰਦਾ ਅੰਦਾਜ਼ੀਏ ਬੋੜਾ ਵੀ ਹੈ ਐਂ ਸਾਬਤ ਕਰਨਾ ਨਾਲ ਦੀ ਨਾਲ ਅੰਦਾਜ਼ ਬੋੜਾ ਕਿਉਂ ਹੈ ਖਸੂ ਕੀਏ ਪਕਸ ਦਾ ਜੀ ਤੈਨੂੰ ਅੰਦਾ ਜੀ ਦੀਦਾ ਨਹੀਂ ਕੋਕੀ ਬੋੜਾ ਵੀ ਹੈ ਫਰਕ ਨਹੀਂ ਹੁੰਦਾ ਆਵਾਜ਼ ਵੀ ਉਹਦੀ ਚਾਹੇ ਸਤਪਤਾਲ ਦੀ ਬਾਣੀ ਹੈ ਪਰ ਹੈ ਤਾਂ ਸਹੀ ਉਹ ਆਵਾਜ਼ ਤਾਂ ਹੈ ਸਤਮਤਾਲ ਦੀ ਚਾਹੇ ਪਰ ਹੈ ਤਾਂ ਸਹੀ ਨਾ ਜੇ ਪੂਰਾ ਧਿਆਨ ਨਾ ਸੋਂ ਤਾਂ ਸੁਣੀ ਜਾਂਦੀ ਧਿਆਨ ਤੇ ਛੋੜ ਦੇ ਬਿਚਾਰਾ ਧਿਆਨ ਨਹੀਂ ਦੀ ਸੁਣਦੀ ਤੇਰੀ ਉਛਾਈ ਨਹੀਂ ਤੇ ਤੂੰ ਪਤਾ ਹੀ ਨਹੀਂ ਵੀ ਸਤਪਤਾਲ ਦੀ ਬਾਣੀ ਵੀ ਕੁਝ ਹੁੰਦੀ ਹੈ ਤੇ ਕਦੇ ਦੱਸਿਆ ਹੀ ਨਹੀਂ ਚਾਹ ਕੋਈ ਜਾਸਦੰਦਾ ਫਿਰ ਧਿਆਨ ਨਾ ਸੋਂਦਾ ਫਿਰ ਛੁੱਟ ਜਾਂਦਾ ਸੇਣੀ ਉਹ ਗੱਲ ਹੋਰ ਗੱਲ ਕੁਛ ਨਹੀਂ ਇਹ ਗੱਲ ਦੱਸਦਾ ਹੀ ਕੋਈ ਨਹੀਂ ਸ਼ਬਦ ਲੋਕ ਕਹਿੰਦੇ ਜਰੂਰ ਨੇ ਸ਼ਬਦ ਆ ਰਾਮ ਦਿਓੜਾ ਪਾਇਆ ਹੋਇਆ ਬਾਹਰ ਅਪਾ ਕਹਿੰਦੇ ਆ ਵੀ ਕੋਬਰ ਫੜਾ ਅੰਗਰੇਜ਼ਾਂ ਨੇ ਇੱਕ ਦਾ ਹੋਇਆ ਸੀ ਸ਼ਬਦ ਹੋਇਆ ਤਾਂ ਸਭ ਕੁਝ ਹੋ ਗਿਆ ਉਹ ਨਹੀਂ ਸ਼ਬਦ ਕਾ ਜਿੱਦੇ ਜੇ ਉਹ ਰਿਪੋਰਟ ਹੋ ਜਾਂਦਾ ਹ ਉਹਦੇ ਨਾਲ ਹੋਇਆ ਸੀ ਆ ਸਾਰਾ ਕੁਝ ਪੈ ਗਿਆ ਚਲੋ ਕੁਝ ਕੁਸ਼ ਕਹਿਦਾ ਕੋਈ ਕੁਸ਼ ਕਹਿੰਦਾ ਸ਼ਬਦ ਬਾਰੇ ਰੀਅਲ ਸ਼ਬਦ ਬਾਰੇ ਕੋਈ ਜਾਣ ਗੁਰਬਾਣੀ ਤੋਂ ਬਣਾ ਕੇ ਕਿਹਦਾ ਗੁਰਬਾਣੀ ਦੇਖਿਆ ਪਰ ਗੁਰਬਾਣੀ ਦਾ ਵਿਚਾਰ ਕੇ বুঝਿਆ ਹੀ ਆ ਸਮਝਿਆ ਹੀ ਆ ਉਹਨੇ ਜੋੜੇ ਨੇ ਜਿੱਦੇ ਵੀ ਸਾਡੇ ਕੋਲ ਹੁਣ ਤੱਕ ਜਿੰਨਾ ਸਾਡੇ ਕੋਲ ਪਿਆ ਨਾ ਅੱਛਾ ਇਹ ਸਿਰਫ ਇੱਕ ਕੁਪੀ ਹੋਈ ਵਸੂ ਦੇ ਹਿੱਸੇ ਦਾ ਹੈ ਹਾਂ ਕੁਬਸੂ ਕੰਪਲੀਟ ਜੀ ਹੋ ਜੀ ਅਸੈਂਬਲ ਕਰਨੀ ਆ ਉਹ ਬਸੂ ਬਣਿਆ ਤੱਕ ਟੁੱਟ ਗਿਆ ਖੜ ਗਿਆ ਉਹ ਜਸਟ ਹੋ ਗਿਆ ਹੁਣ ਕਿਲਾ ਬਣੂਗਾ ਪਾਟਾਰੇ ਉੱਪਰ ਲੱਗੂਗੇ ਪਾੜ ਰਵੇ ਇਸ ਤਾਂ ਨਾ ਗੱਲ ਹੋ ਗੁਰਦਾਲ ਹੋ ਰੂ ਉਹ ਵੀ ਜੀ ਹੋਰੀ ਪਾਟ ਹੈਗੇ ਸਾਡੇ ਕੋ ਸਾਰੇ ਉਹ ਕਿੱਥੇ ਕਮੈਂਡ ਡਰਦਾ ਹੈ ਕਿੱਥੇ ਜੋੜਦਾ ਜੋੜਨੇ ਨੇ ਜੋੜ ਕੇ ਨਕਸ਼ਾ ਪੂਰਾ ਬਣਾ ਦੇ ਇਹ ਹੁਣ ਕਲੇਦਰਸ਼ਨ ਇਹਨੂੰ ਕਹਿੰਦੇ ਦਰਸ਼ਨ ਜੇ ਤਾਂ ਜੋੜ ਲਿਆ ਕੰਪਲੀਟ ਹੋ ਗਿਆ ਫਿਰ ਦਰਸ਼ਨ ਹੋ ਜੂਗੇ ਰਹਿ ਗਏ ਫਿਰ ਉਹਨਾਂ ਨੂੰ ਅਥਰੈ ਨੂੰ ਕਰਤੀ ਪਰ ਦੇਖਦੇ ਆ ਕਿ ਨਾ ਜੋੜ ਸਕਦੇ ਆ ਆਪਾਂ ਠੀਕ ਹੈ ਜੀ ਐਨਾ ਜੋੜਿਆ ਸੀ ਕਿਸੇ ਨੇ ਪਹਿਲਾਂ ਪਪਾ ਦੇਹ ਨੇ ਜੋੜ ਕੇ ਇਹ ਆ ਕਥਾ ਭਾਵੇਂ ਬਣ ਤੇ ਇੱਕ ਕਥਾ ਮੁੜ ਕਥਾ ਬਣ ਗਈ ਨਾ ਨਾ ਬੋੜਾ ਹੋ ਗਿਆ ਤੇ ਆਪ ਤਾਂ ਸਾਡੀ ਬਰਸਦਾ ਮੈਂ ਕਹਿੰਦਾ ਸੀ ਬਈ ਗੱਲ ਇਹ ਹੈ ਕਿ ਸਾਡੂ ਸੰਸਾਰੀਆਂ ਨੂੰ ਧੁਖ ਦੇਉਂਦੀ ਨਾਮ ਦੀ ਨਾਮ ਹਰ ਵਕਤ ਬਰਸਦਾ ਨਾਮ ਹਰ ਵਕਤ ਕੋ ਉਮਰ ਤਾਂ ਸਾਡੀ ਬਰਸਦਾ ਮੁੱਕਿਆ ਕੁਝ ਨਾ ਸਾਡੇ ਕੋ ਬੰਤੀ ਕੋਈ ਹੈ ਕੋਈ ਕੁਬੇ ਜਾਲ ਜਦ ਕਬੀਰ ਦੇ ਅੰਦਰ ਭੁੱਖ ਜਾਗੀ ਵੈਦਿਕ ਹੈ ਵੈਦਿਕ ਕੋਈ ਬਣ ਗਈ ਚਾਹੇ ਉਹ ਵੈਦ ਤਾਂ ਕੋਈ ਕੁਝ ਵੀ ਬਣ ਸਕਦੀ ਹੈ ਅਲੱਗ ਅਲੱਗ ਬਣੀ ਹੈ ਵੈਦ ਬਣੀ ਬਣੀ ਚਾਹੇ ਵੈਦਾਂ ਮਣੀ ਮਣੀ ਪਈ ਲੋ ਨੂੰ ਤੌਰ ਆਕਾਸ਼ਵਾਣੀ ਬਣੀ ਹੋਈ ਹਾਂ ਉਹ ਜਿੱਤਾ ਜਦੋਂ ਹੋ ਗਈ ਵੀ ਤੂੰ ਐ ਕਰ ਲੈ ਹਾਂ ਉਹਦਾ ਆਕਾਸ਼ਵਾਣੀ ਹੋਈ ਉਹਨੂੰ ਆਪੇ ਦੱਸਾਂ ਪਿਆ ਉਹਨੂੰ ਸਦਾ ਹੀ ਪਈਆਂ ਕੱਲ੍ਹ ਉਹ ਕੋ ਦਈ ਹੈ ਦੀ ਤਰਾਏ ਉਹ ਤਾਂ ਗੱਲ ਨਾ ਬਰਮਾ ਵੀ ਸੁਝੀ ਤੇ ਨਹੀਂਆਂ ਕੱਲ੍ਹ ਆਇਆ ਹੋ ਉਹ ਵੜੇ ਕੋਈ ਛੱਦੇ ਇਸੇ ਦੀ ਹੋਰ ਹੋਈ ਵੀ ਉਹ ਨਾ ਸਮਝ ਨੂੰ ਨਾ ਉਹ ਤਾਂ ਬਾਤ ਬਣਦੇ ਨੇ ਹਾਂ ਇਹ ਦੱਸਾ ਤੇ ਕਦੇ ਤਨਵਾਸ਼ ਬਣਦੇ ਨੇ ਜੇ ਇੱਕ ਦਸੂ ਤਾਂ ਹੀ ਤੈਨੂੰ ਬਣਾਉ ਕੋਈ ਅਜੇ ਇੱਕ ਹੋਊਗਾ ਉਹਦੇ ਨਾਲ ਬਿੱਤਾ ਤਰੇ ਕੇ ਲੱਗਦਾ ਇਹ ਬਿੱਤਾ ਤਰੇ ਆ ਜਿਹੜਾ ਲੋਕੀ ਲੱਗਿਆ ਦਿੱਤਾ ਉਹਦਾ ਨਾਮ ਤਰੇ ਕੇ ਤੇ ਇਹ ਗੱਲ ਤਰੇ ਤਾਂ ਇੱਥੇ ਬੜੀਆਂ ਠੱਗੀਆਂ ਸਿੱਧਾ ਮਗਰ ਵੀ ਆਉਂਦਾ ਦੱਸਾ ਆਇਆ ਹਾਂ ਮੈਂ ਤੈਨੂੰ ਤਰ੍ਹਾਂ ਸੁਣੋ ਬਾਦ ਸੁਣੋ ਬਾਦ ਤੇਰਾ ਨੇ ਦਿੱਤਾ ਤੈ ਰੱਖਿਆ ਆ ਤੇ ਦੋਸਤ ਸਦੀਆਂ ਜ਼ਿਆਦੀ ਗੱਲ ਕੀਤੀ ਹੋਈ ਹਮਮ ਫਿਰ ਉਹਦਾ ਹੋਇਆ ਉਹ ਸਾਖੀ ਦਸਾਈ ਹੋਈ ਹਮਮ ਆਪਣੇ ਵੀ ਸਾਖੀ ਦਾ ਸੁਣਾਈ ਹੋਈ ਆ ਉਹ ਜਰੂਰ ਹਮਮ ਸਮਝ ਗਏਂ ਤਪਦਾ ਜਨ ਵੀ ਉਹਨੇ ਦੱਸਿਆ ਜਿਵੇਂ ਦੱਸਦੇ ਨੇ ਹਮ ਵਰਮਾ ਬਿਸ਼ਨੂ ਸ਼ਿਵਜੀ ਦਾ ਉਪਚਾਰ ਦੀ ਦੱਸਿਆ ਹਮ ਮਸਾਦੋਂ ਤੋਂ ਪਰਕਾਰਦੇ ਉਹ ਦੱਸੇ ਸ਼ਿਵਜੀ ਵਰਮਾ ਬਿਸ਼ਨੂ ਐਸੇ ਦਰੁ ਪਾਠਨ ਦੱਸਣ ਵੀ ਆਏ ਨੇ ਉਹ ਜਾਨੀ ਉਹ ਜਿਹੜਾ ਹੈ ਤੇ ਦਸਤਾਤ ਰਹਿਦਾ ਗੁਰੂ ਕੋਈ ਵੀ ਦਿਓ ਤੁਸ ਹਮ ਉਹ ਦੱਸਦਾ ਗੱਲ ਨਹੀਂ ਰਿਹਾ ਕਿਤੇ ਵੀ ਨਹੀਂ ਕਰਦਾ ਉਹਨੂੰ ਇਹ ਵੀ ਨਹੀਂ ਕਹਾਂ 24 ਉਤਾਰਨ ਜੋ ਹੂੰ ਤੂੰ ਦੱਸ ਸ਼ਿਵਜੀ ਬ੍ਰਹਮਾ ਵਿਸ਼ਣ ਤੇ ਕੋਈ ਉਤਾਰ ਬਣਾਇਆ ਹਾਂ 24 ਦੇ ਗੁਰੂ ਬਣਾਏ ਨਹੀਂ ਫਿਰ ਹਾਂ ਹਾਂ ਉਹਦੇ ਜਿਹੜੇ ਕੋਈ ਸ਼ੈ ਐਂਡਲ ਰਹੇ ਨੇ ਜਿਹੜੇ ਹੁਣ ਮਣ ਕੇ ਉਹ ਉਹਦਾਂ ਨੂੰ ਫਿੱਟ ਹੋ ਜਾਣਗੇ ਉੱਥੇ ਕਿਉਂ ਨਹੀਂ ਮਾ ਇਹ ਹੁੜੂ ਹੁੜੂ ਦੀ ਬਾਤ ਉੱਥੇ ਆਪਾਂ 2 ਦੀ ਪੁਆਇੰਟ ਗੱਲ ਕੀਤੀ ਹੈ ਫੋਨ ਚ ਚੱਲ ਰਿਹਾ ਨੇ ਹੋ ਹਾਂ ਹਾਂ ਇਹਨਾਂ ਜਾਣ ਕੇ ਕਹਤਾ ਅਸੱਚੇ ਸਾਥੀ ਬਣਾਇ ਜੜੜੇ ਬ੍ਰਹਮਾ ਜਾਨੀਆਂ ਨੇ ਲਿਖੀਆਂ ਨੇ ਇਹ ਆਹਦੀ ਹੱਦ ਕਰ ਨੂੰ ਕਹਤਾ ਵੀ ਬ੍ਰਹਮਾ ਵੀ ਹੁਣ ਨੇ ਭੱਜ ਗਏ ਸਦੀ ਉੱਜਵਾਰ ਕੋਲ ਕੱਲ ਤਾਂ ਵੀ ਕਰਦੀ ਸੀ ਕਿਵੇਂ ਕਰਦੀ ਪਰ ਯਾ ਇਦਰ ਫਿਰ ਹੋਰ ਰੰਗ ਹੈ। ਜਿਹਦੀ ਕਿਸੇ ਨੂੰ ਭੁੱਖ ਨਹੀਂ ਹੁੰਦੀ। ਜਦ ਵੀ ਭੁੱਖ ਜਾਂਦੀ। ਕਿਉਂ ਜਾਂਦੀ ਹੈ ਸਵਾਲ ਹੈ ਭੁੱਖ ਕਿਉਂ ਜਾਂਦੀ ਹੈ? ਕਾਹਦੀ ਜਾਗਦੀ ਹੈ? ਆਪ ਕਿਉਂ ਜਾਂਦੀ ਹੈ? ਨਾਲ ਕੋਈ। ਹੂੰ। ਉਹ ਉਹਨੂੰ ਜਾਂਦੀ ਹੈ। ਜਿਹਨੂੰ ਮਾਇਆ ਵਾਲਾ ਜਿਹੜਾ ਚੱਕਰੀ ਦਾ ਮਾਇਆ ਬਲ ਪਿੱਟ ਕਰ ਲਓ। ਸਦਾਰ ਵਾਲ ਪਿੱਟ ਕਰੇ ਤੋਂ ਬਿਨਾ। ਨਾਮ ਦੀ ਭੁੱਖ ਜਗਦੀ ਹੋਈ ਨਹੀਂ। ਜਨਾਜ਼ਰ ਸੰਸਾਰ ਦੇ ਵਿੱਚ ਇੱਛਾ ਹੈ ਕਿ ਉਹ ਵਿੱਚ ਕੋਈ ਚੀਜ਼ ਪ੍ਰਭਾਵ ਕਰਦੀ ਆਪਨ। ਸੰਸਾਰ ਦੀ ਦੁਵੀ ਤੋਂ ਨਹੀਂ। ਉਹਦਾ ਨਾਮ ਦੀ ਭੁੱਖ ਨਹੀਂ ਲੱਗਦੀ ਆ। ਚੜ੍ਹਦੀ ਚੜ੍ਹਦੀ ਉਹ ਚੀਜ਼ ਦਬਦੀ ਹੀ ਹੁੰਦੀ। ਜਿਵੇਂ ਆਕਰ ਜਲਣ ਲੱਗੇ ਬੜੀ ਜੀ ਉਦਕ ਥੋੜਾ ਜਿਹਾ ਪਾਣੀ ਛਲਦੀ ਹੈ ਉਦ ਜਲਦੀ ਬੁਝ ਜਾਂਦੀ ਹੈ ਬੁਝ ਜਾਣਾ ਅਜੇ ਵੀ ਬ੍ਰਜੰਡ ਦੀ ਬੜੀ ਸਾਤੀ ਜੇ ਤਾਂ ਹੀ ਬੁਝੂ ਚਾਹੀ ਕੋਈ ਚੀਜ਼ ਪ੍ਰਭਾਵਤ ਕਰੇ ਅੱਗ ਨੂੰ ਲੱਗਦੀ ਹੈ ਸਮਝ ਜਤਨ ਕਰੀਦਾ ਜਲਣ ਦਾ ਹਰੂ ਜਤਨ ਨਾਲ ਬਣਾਦਾ ਉਹ ਜਲਦੀ ਹੀ ਹੁੰਦੀ ਨਾ ਨਹੀਂ ਜਲਦੀ ਮੈਂ ਜਲਦੀ ਹੈ ਨਾ ਬੁਝਦੀ ਹੈ ਹਾਂ ਬੁਝੀਦਾ ਹੋਵੇ ਨਹੀਂ ਲੱਗੀ ਹੋਵੇ ਫਿਰ ਹੋੜੀ ਲੱਗੀ ਹੋਇਆ ਮਾਇਆ ਦੀ ਹੈ ਤ੍ਰਿਸ਼ਨਾ ਉਹ ਬੁਝਦੀ ਦੀ ਹੈ ਪਹਿਲਾਂ ਤਾਂ ਉਹ ਬੁਝੇ ਨਾ ਬੁਝੀਦਾ ਨਹੀਂ ਤਾਂ ਬਸ ਪਹਿਲਾਂ ਤਾਂ ਲੱਕੜੀ ਜਿੱਲੀ ਹੋਊ ਜਦੋਂ ਚੱਲ ਹੱਗ ਕੇ ਮੈਂ ਉਹ ਗਿੱਲੀ ਗਿੱਲੀ ਰੋੜੀਆ ਸਰੀਤਾ ਪਾਣੀ ਦਾ ਬੁਲਬੁਲਾ ਦਾ ਲਈ ਫਿਰਦਾ ਬੈਠਾ ਰਹੇ ਤੇ ਚਾਹੁੰਦਾ ਗਿਆਨ ਪਛੰਡੇ ਇਹਦੀ ਇਲਤੋ ਆਂ ਕਦਾ ਜਿਆਦਾ ਉਹ ਪ੍ਰਚੰਡਤਾ ਦਾ ਜਿਆਦਾ ਉਹ ਵੀ ਨਾਲ ਪਾਣੀ ਜਲ ਜੂ ਪਾਣੀ ਆਇਆ ਯਾ ਜਦ ਤੱਕ ਰੋਪੜ ਸੱਜੇ ਪਾਣੀ ਦੇ ਜਿਆਦਾ ਪਾਣੀ ਲੱਗਣ ਤੇ ਅਲੱਗ ਹੋ ਜੂ ਤਾਂ ਇਹ ਲੱਕੜਾ ਕੋ ਫੜੂ ਜਿੰਨਾ ਜਿੰਨੀ ਗਿੱਲੀ ਹੋਣੀ ਜਦੋਂ ਇਹਨੂੰ ਉਹਦੇ ਪਾਣੀ ਸੜੂਗਾ ਵਸਦਾ ਪਹਿਲਾਂ ਪਹਿਲਾਂ ਸੱਤੇ ਮਾਇਆ ਛੁੱਟਦੀ ਨੂੰ ਛੁੱਟਦੀ ਆ ਸੁੱਕਦੀ ਸੁੱਕਦੀ ਜਿਹੜਾ ਅਸੀਂ ਗਿਆਨ ਕਰਦੇ ਹਾਂ ਇਹਦਾ ਪਾਣੀ ਸੁੱਕ ਰਿਹਾ ਹਾਂ ਇਹਦਾ ਬਦਲ ਨਹੀਂ ਘਟ ਰਿਹਾ ਪਾਣੀ ਸੁੱਕ ਰਿਹਾ ਪਾਣੀ ਸੁੱਕ ਰਿਹਾ ਉਹ ਸਰਪ ਜਾਂ ਪਾਣੀ ਪੂਰਾ ਸੁੱਕ ਜਾਂਦਾ ਫਿਰ ਲੱਕੜਾ ਕੋ ਫੜਨ ਲੱਗਿਆ ਦੀ ਜਦ ਫੇਰ ਉੱਤੋਂ ਨਾ ਪਾਣੀ ਪੈ ਜਾ। ਉੱਤੋਂ ਵੀ ਪੈ ਸਕਦਾ ਨਾ ਪਾਣੀ। ਸੁੱਕੀਆਂ ਲਖੜਾਂ ਦੇ ਹੈ ਪਤਾ ਲੱਗ ਜਾਣਾ ਆਪਾਂ ਨੂੰ ਉਹਦਾ ਵਿਆਹ ਕਰ ਰਹੀ ਹੈ ਕੰਵਰਟਰ। ਪਤਾ ਲੱਗ ਜਾਂਦਾ ਹੈ। ਪਤਾ ਲੱਗ ਜਾਂਦਾ ਹੈ ਜੇ ਜੇ ਧਿਆਨ ਉਹ ਵੇਰ ਨੂੰ ਕਰ ਲਾ। ਫੇਰ ਪਤਾ ਲੱਗਦਾ ਸਾਰੀ ਗੱਲ ਦਾ। ਜੇ ਧਿਆਨ ਨਹੀਂ ਪਧਾਈ ਦੀ ਕਰਨਾ। ਜਦੋਂ ਕਹਿੰਦੇ ਕਿ ਕੀ ਕਰੀਏ ਜਿਹੜੇ ਹਮ ਤਾਂ ਕੀ ਕਰੀਏ ਲਾ ਕਰੋ ਹੁਣ ਕਹਾਂਗੇ ਜੀ ਭਾਈਓ ਓਏ ਆਉਂਦਾ 2 ਮਿੰਟ ਜਦਾਂ ਤੇ ਕੀ ਕਰੀਏ ਕਰੀਏ ਤਾਂ ਸਭ ਕੁਝ ਕਰੀਏ ਤੇ ਦੱਸੀਏ ਸਵਾਹ ਕਰਦਾ 2-4 ਸਾਲ ਸਾਰਾ ਕੁਝ ਫਿਰ ਤੁਹਾਨੂੰ ਦੱਸੀਏ ਵਿਆਂ ਮਹਿਲ ਬਣਾਉ। ਭਾਈ ਜਾ ਬਣਦਾ। ਤੇ ਵੀ ਹੁਣ ਤੁਹਾਨੂੰ ਪਰ ਤੁਹਾਨੂੰ ਪਤਲਾ ਸਾਲੋ ਬਿਠਾਣਾ ਸੌਣਦੇ ਨੂੰ। ਛੋਟ ਗੱਲ ਸਮਝ ਆਉਣੀ। ਸਮਝ ਆਉਂਦੀ ਆ ਬਣੀ ਪੜਨ ਤੁਹਾਨੂੰ ਪਤਾ ਬਿਨੂੰ ਪਤਾ। ਦੋ ਟੋਲਾਂ ਦੇ ਉਹਨਾਂ ਦੇ ਪਿੱਛੇ ਉਹ ਮੈਂ ਉਹਰੇ ਬਾਅਦ ਫਰਕ ਹੋਣਾ ਕਿ ਹਰ ਕੋਣਾ ਕਿ ਆ ਇਹ ਤਾਂ ਨਗ ਪਹਿਲਾਂ ਸੀ ਜਿਆਦਾ ਤਾਂ ਹੈ ਨਹੀਂ ਲੋਕਾਂ ਨਾਲ ਜਿਆਦਾ ਫਰਕ ਗਿਆ ਆ ਬਬਲ ਰੋ ਜਾਂਦਾ ਤਾਂ ਉਹਨਾਂ ਦੇ ਗੱਲ ਹੁਣ ਜਾ ਮੈਂ ਬੋਲਦਾ ਮੈਨੂੰ ਲੱਗਦਾ ਕਿ ਕਿਸੇ ਦੇ ਉੱਤੇ ਕੀ ਹੋ ਹੁੰਦੀ ਰਹੀਏ ਗੱਲ ਨੂੰ ਪਤਾ ਹੋਵੇ ਤਾਂ ਸੁਣੋ ਮੋਈ ਕੋ ਜਿਹੜੀ ਗਹਿਰੀ ਗੱਲ ਹੁੰਦੀ ਹੈ ਜਿਆਦਾ ਉਹ ਆਪਣੇ ਕੋ ਸੁਭਾਓ ਬਣਿਆ ਨਾ ਸਾਡੇ ਨਾਲ ਹੀ ਗੱਲ ਕਰਨ ਲਾ ਜਿਹੜੇ ਬੰਦੇ ਪਿੱਛੇ ਫੋਲੋ ਕਰਦੇ ਆ ਰਹੇ ਆ ਗੱਲ ਨੂੰ ਆ ਤੁਸੀਂ ਰੱਖੀ ਜਾਂਦੀ ਹਵਾ ਇੱਟੇ ਘਲੇ ਨਹੀਂ जिन्ना जर्मादी भूख hmm. जे कोई चीज फेर प्रभावित कर जेवेगा संसार दी ओते hmm. बीच एडका चीज हो जाता फिर कई बार थोड़ा सा चाके घर भी तरपंदा कई बार अधूरा सा पैदा घरू रेयाते जेडिदा बीच एड साले की तिथि चले थे हरमन को ਚੱਲੇ ਨਹੀਂ ਚੱਲੇ ਨਹੀਂ ਚਾਲੇ تھے ਚਾਲੇ تھے ਸੜਕ ਕੀਤੀ ਸੀ ਉਹ ਸੁਣਨੇ ਬਣਿਆ ਸੀ ਵਿਚੇੜ ਕੋ ਜੀ ਵਿਚੇੜ ਕੋ ਕੀ ਕਰਿਆ ਜਦੋਂ ਬਰੇਆ ਬੋਈ ਕਰ ਪੱਗੇ ਤੇ ਲੋਕਾਂ ਨੂੰ ਕਹਾਂਗੇ ਤਾਂ ਸਾਰਿਆਂ ਨਾਲ ਬਰਬਰੀ ਕਰੂੰਗੀ ਕੋਗੜ ਕੋਡਾੜਿਆ ਨਾ ਸੱਚ ਆ ਉਹ ਲੋਕਾਂ ਨੇ ਤਾਂ ਰਹਿ ਕੇ ਕੋਡੜ ਲੈ ਬਿਕਾਣੋ ਜੀ ਆ ਕੇ ਸੁਣੋ ਇਹ ਮੇਰੇ ਹੁਣ ਜਿਹੜੇ ਬਲੂ ਆ ਰਹੇ ਆ ਵੀ ਮੈਂ ਕਹਿੰਦਾ ਵੀ ਇਹ ਜੇ ਪ੍ਰਭਾਵ ਤੋਂ ਵੀ ਜੀ ਕਰ ਰਹੀ ਨਹੀਂ ਅਟਕਦਾ ਉੱਥੇ ਉੱਥੇ ਰੁਕ ਰੁਕ ਚੱਲ ਸਕਦਾ ਉੱਥੇ ਹਾਂ ਚਾਹ ਇਹ ਨਹੀਂ ਚੱਲ ਸਕਦਾ ਰੁਕ ਰੁਕ ਪਰ ਉਹ ਤਾਂ ਚਲਿਆ ਹੀ ਨਹੀਂ ਸੀ ਅਜੇ ਤੁਰੇ ਜਾਂਦੇ ਨੂੰ ਕੋਈ ਦੀਸ਼ਾਂ ਪਰਵਾਹੁਤ ਕਰਦੇ ਨਹੀਂ ਜੀ ਲੋ ਉਹ ਬੜੇ ਕਸਰਿਤੇ ਹੋ ਕੇ ਬੈਠ ਜਾਂਦੇ ਉਹ ਹੈ ਮੱਤਾਂ ਨਹੀਂ ਜਿਹੜੀ ਸੱਤ ਕੋਲ ਇਹ ਰਾਹ ਘਟ ਨੇ ਜਿਨ੍ਹਾਂ ਬਣਾਈਆਂ ਨੇ ਉਹ ਬੰਦੇ ਨੇ ਰਾਹ ਜਿਹੜੇ ਜਿਹੜੇ ਵਿਚਾੜ ਕਾ ਜੀ ਤੋ ਸੱਤ ਬੈਠੇ ਨੇ ਉਹਦਾ ਰਾਹ ਦੇ ਰੋੜੇ ਨੇ ਜਿਨ੍ਹਾਂ ਦਾ ਵਿਚਾੜ ਕਾ ਜੀ ਹੋ ਰਹਾ ਦੇ ਰੋੜੇ ਨੇ ਉਹ ਰੋੜੇ ਵੀ ਦਸਣੇ ਨੇ ਅੱਡਾ ਰੋੜੇ ਕੀ ਨੇ ਖੇ ਕੀ ਹੈ ਕੀ ਹੋ ਕੀ ਹੈ ਉਹ ਅੱਧਾ ਰੋੜੇ ਦਾ ਉਹ ਜਿਹੜਾ ਇਤਕਾਲ ਸਾਹਿਬਾ ਡੇਰੇ ਬਣਾ ਕੇ ਬਹਿ ਗਏ ਜਿਹੜੇ ਡੇਰੇ ਦਾ ਨਾ ਰੋੜੇ ਉਹਨਾਂ ਨੇ ਜਿਹੜੇ ਚਲੇ ਲੈਣੇ ਗਾਂ ਚੋਲਣੇ ਜਿਹੜਾ ਉਹਨਾਂ ਡੁੱਲਗਾ ਵਾਹ ਨਹੀਂ ਚੋਲਣਦੇ ਜਿਹੇ ਰੋੜੇ ਹੁੰਦੇ ਰੋੜਾ ਪਾਣੀ ਰੋਕਦਾ ਹੀ ਹੁੰਦਾ ਇਹ ਜਿਹੜੇ ਬੀਟੀ ਅੜਗਾ ਕੀ ਕੋਹਦਾ ਉਹ ਤਾਂ ਪੈਸੇ ਦੀ ਸਟੇਜ ਦੀ ਗੱਲ ਹੈ ਜੇ ਜਿਹੜੀ ਕਵੀ ਇਹ ਕਹਿੰਦਾ ਉਹ ਲੋੜਾ ਹੋਰ ਬਾੜਦਾ ਇਹ ਪਹਿਲੀ ਸਟੇਜ ਦੀ ਗੱਲ ਚੱਲੇ ਉਹ ਤਾਂ ਸਾਥ ਬੜੇ ਸੀ ਕੀਤਾ ਸੀ ਉੱਥੇ ਹਟੇ ਸੀ ਤੋਂ ਥੋੜੀ ਮੰਗਤਾ ਹੋਣ ਲੱਗੀ ਰੋਟੀ ਨਹੀਂ ਬੈਠੇ ਰਹਿਣ ਲੱਗੀ ਕੁੜੀ ਕੁਝ ਜ਼ਿਆਦਾ ਹੋ ਸੀ ਥੋੜੀ ਉਹ ਲੈਵਲ ਦੇ ਬੁੱਢੀ ਅੜੇ ਆਦਮੀ ਉੱਪਰ ਬਾਵਤ ਹੋਗੇ ਕਈ ਗੱਲਾਂ ਉਹ ਕਹਿੰਦੇ ਜੀ ਉਹ ਐ ਉਹ ਗਿਆ ਲੱਗਿਆ ਬੇਨਾਜ਼ੀ ਭੋਜਾ ਠੀਕ ਉਹ ਇੱਛਾ ਸ਼੍ਰੀ ਕਮ ਕਰਦੀ ਹੁੰਦੀ ਉਹ ਜਿਹੜਾ ਕਹਿੰਦੇ ਨੇ ਤਾਂ ਆਪ ਠੀਕ ਵੀ ਪਰ ਅਸੀਂ ਤਾਂ ਉਹਨੂੰ ਵੈਸੇ ਨਾਲ ਹੀ ਕਰਦੇ ਹਾਂ ਕਿ ਉਹ ਜੋ ਮੰਗੇ ਖਾਦਰ ਆਪਣੇ ਤੇ ਸੋਈ ਸੋਈ ਦੇਵਾੜੀ ਰਹੇ ਚੋਦੀ ਉਹ ਯਾਰ ਤਾਂ ਸਭ ਕੋਈ ਮੰਨਦਾ ਪਰ ਆਪਣਾ ਤਾਂ ਬੰਨ ਸੋ ਜਾਂਦਾ ਤਾਂ ਹੀ ਨਾ ਮੰਗੜਾ ਬੋਲਣ ਦੀ ਕਹਾਜਸ ਹੋਤੇ ਮੰਗੜਾ ਜੇ ਦਿਲਦਾ ਨਾ ਹੋਵੇ ਤਾਂ ਅਜਾਸ ਮੰਗੜਾ ਦੀ ਵੀ ਕੀ ਲੋੜ ਸੇਤੋ ਲੋਹਰੇ ਬਗੜਾ ਸੇ ਤੋਂ ਖਾਂਗੇ ਆਦਗੁਰ ਕੀ ਹੁੰਦੀ ਲੈ ਆਦਗੁਰ ਇਹ ਨਮੈ ਜੋ ਬਾਦਗੁਰ ਇਹ ਨਮੈ ਇਹਦਾ ਆਦਗੁਰ ਦੇਵ ਜਿਹਦੇ ਨਾਲ ਬੁਥੀ ਹੈ ਬੁਥੀ ਜਿਹਦੇ ਨਾਲ ਹੈ ਉਹਨੂੰ ਬਚਾਉਣਾ ਜੇ ਉਹ ਬਰੁਨੀਆ ਹੋਰ ਦੇਰ ਹੈ ਜੇ ਉਹ ਹੈ ਸੀ ਜੇ ਜਿਹੜੀ ਪੁਜੀਸ਼ਨ ਪੁਜੀਸ਼ਨ ਵਿੱਚ ਜੇ ਉਹਨੂੰ ਰੋਗ ਲੱਗਿਆ ਤਾਂ ਫਿਰ ਇਸਤੀ ਸੱਜੀ ਸੇਸਤੀ ਵੀ ਲੋਡ ਪਈਏ ਜੀ ਇਸ ਇਸ ਚੀਜ਼ ਦਾ ਆਦੋ ਹੋਇਆ ਕਾਰਨ ਕਾਰਨ ਪ੍ਰਭ ਇੱਕ ਹੈ ਉਹੜਾ ਪ੍ਰਭ ਗੁਰਦੇਵ ਉਹੀ ਕਾਰਨਦਾਰ ਹੈ ਸ੍ਰਿਸ਼ਟੀ ਦਾ ਕਾਰਨਤਾ ਇਹ ਹੈ ਕਿ ਇਹਦੀ ਵਜ੍ਹਾ ਨਾਲ ਸ੍ਰਿਸ਼ਟੀ ਸਾਜਣੀ ਪਈ ਜੇਦੀ ਵਜ੍ਹਾ ਨਾਲ ਸ੍ਰਿਸ਼ਟੀ ਸਾਜਣੀ ਪਈ ਕਿਉਂਕਿ ਝੋਲ ਪਿਆ ਹੋ ਗਿਆ ਉਹਨੂੰ ਦੂਰ ਕਰਦੇ ਤੇ ਅ ਦੀ ਕਮੀ ਹੋ ਗਈ ਗਿਆਨ ਪੂਰਾ ਕਰਨਾ ਤਾਂ ਸ੍ਰਿਸ਼ਟੀ ਸਾਜਣੀ ਪਈ ਇਹ ਤਾਂ ਹੋ ਗਿਆ ਕਾਰਨ ਹੋ ਕਾਹਨ ਕੀਏ ਜੋ ਕੁਝ ਇਖੇ ਦਾ ਹੈ ਪ੍ਰਗਟ ਕਰਦਾ ਪ੍ਰਗਟ ਕਰਦਾ ਜੀਵੇ ਹੈ ਗੁਪਤ ਕਰਦਾ ਹੋਗਾ ਆਪਣਾ ਜੇ ਸਰੀਰ ਬਣਾਉਂਦਾ ਆਪੇ ਬਣਾਉਂਦਾ ਖਾਣ ਪੀਣ ਦਾ ਆਪੇ ਕਰਦਾ ਆਪਣੇ ਮੂੰਹ ਨੂੰ ਝਾਪੇ ਹੱਥ ਜਾਂਦਾ ਇਹ ਜਿਹੜਾ ਏਕ ਹੈ ਇਹ ਕਾਰਨ ਧਾਰਨਾ ਆਪ ਇਹ ਜਿਹੜਾ ਗੁਰੇ ਨੁੜੇ ਆਦਿ ਇਹ ਇਹ ਕਾਰਨ ਧਾਰਨਾ ਦੂਸਰਾਂ ਨੇ ਭੋਇ ਦੂਸਰ ਕੀ ਦੂਸਰ ਕੋ ਕੀ ਇਹ ਕਮਾਇਆ ਦੂਜੀ ਭਾਇਆ ਹੈ ਤੇ ਹਾਂ ਬਿਲਕੁਲ ਉਹਦਾ ਵੀ ਮਤਲਬ ਇਹੀ ਹੈ ਸਾਰੇ ਅੰਗਲਾਂ ਤੋਂ ਗੱਲ ਕਿੱਥੇ ਜਾਂਦੀ ਹੈ ਕਾਰਨ ਕਾਰਨ ਪ੍ਰਭ ਏਕ ਹੈ एक ਵੀ ਇਹੀ ਆਦਗੁਰੇ ਨਮੋ ਕਰੇ ਕਾਰਨ ਸ੍ਰਿਸ਼ਟੀ ਦਾ ਹੈ ਕਾਰਣੇ ਆਦੋਂ ਦਾ ਮੇਰੀ ਬੁੱਧੀ ਉਹ ਆਪਣੀ ਕਾਰਣਾ ਹੋਈ ਆਦੋਂ ਦਾ ਬਵੇਂ ਬੁੱਧੀ ਕਹਿ ਰਹੀ ਆ ਤਾਂ ਮੈਂ ਜੀ ਨਮਸਕਾਰ ਕਰ ਰਹੀ ਆ ਜਣੀ ਕਿ ਜਿਹੜੀ ਨਮਸਕਾਰ ਕਰ ਰਹੀ ਬੁੱਧੀ ਬੁੱਧੀ ਭਵੇਂ ਇੱਕ ਕਰ ਰਹੀ ਨਮਸਕਾਰ ਇੱਕ ਨੂੰ ਹੋ ਰਹੀ ਨਮਸਕਾਰ ਹਾਂ ਜਿਹੜੂ ਹੋ ਰਹੀ ਹੈ ਉਹ ਪੂਰਨ ਬ੍ਰਹਮ ਉਸ ਵੇਲੇ ਉਹ ਵੜੇ ਬੋਲ ਬ੍ਰਹਮਾ ਜਨਮਸਤਾਰ ਹੋ ਰਹੀ ਹੈ ਕਿਉਂਕਿ ਲਿੰਕੀ ਅੱਧੀ ਚੱਲ ਰਹੀ ਹੈ ਨਾ ਆਦ ਵੀ ਆਦ ਜਿਹੜਾ ਆਦ ਉਹ ਆਪਣੇ ਨਾਲ ਗੱਲ ਕਰ ਰਹੀ ਹੈ ਜਿਹੜਾ ਬੋਲ ਰਿਹਾ ਜਿਹੜੀ ਉਹ ਤੁਹਾਨੂੰ ਉਹ ਵੇਲੇ ਉਹ ਕਿਹਨੂੰ ਕਹਿ ਰਿਹਾ ਆਦ ਉਹ ਬ੍ਰਹਮਾ ਉਹ ਪੋੜ ਹੋ ਗਿਆ ਪਹਿਲਾ ਬੱਚਾ ਸੀ ਹੁਣ ਪੂਰਾ ਹੋ ਗਿਆ ਜਦ ਨੌ ਸੱਜੇ ਲੈ ਤੂੰ ਵੀ ਕਹਿਣਾ ਕਦੋਂ ਨਹੀਂ ਦੋ ਹੈ ਜੇਲਾ ਛੋਟਾ ਵੀ ਹੁੰਦਾ ਉਸ ਤੋਂ ਪੁਰਾਣਾ ਜੇਲਾ ਦਾ ਚਲ ਕੇ ਤੇਰੀ ਜੇਲੇ ਪਰਵਾਂਡ ਕੇ ਲੱਗਾ ਉਸ ਦੰਦਾ ਇਹ ਦੰਦਾ ਜੇਲਾ ਹੁੰਦਾ ਹੀ ਹੈ ਜੇਲਾ ਹੁੰਦਾ ਭਾਈ ਡਿਵੈਲਪਰ ਹੁੰਦਾ ਕਲਾਸ ਦਾ ਰਹਿੰਦਾ ਸੀ ਪੀਪੀ ਫਿਰ ਹੋ ਗਿਆ ਅੱਜ ਡੈਵਲਪ ਹੋਇਆ ਵਿਵੇ ਨੂੰ ਤਾਂ ਬੰਦੇ ਨੂੰ ਸਮਝੇ ਨਹੀਂ ਵੀ ਆਹ ਤਾਂ ਉੱਥੇ ਚਲੇ ਆਇਆ ਹੈ ਜੋ ਦੂਰੋਂ ਚੜ ਕੇ ਆਇਆ ਹੈ ਹੀ ਬੁੱਧੀ ਬੁੱਧੀ ਉੱਥੇ ਹੀ ਵੱਢੀ ਚਲੀ ਗਿਆ ਹੈ ਕੋਈ ਮੈਂ ਕੋਰ ਉਹੀ ਕਹਿ ਲਈ ਬੈਠਾ ਉਹ ਵਸਤਾ ਨਾ ਸਰ ਸਵਾਲ ਹੈ ਨਾ ਕੂਨ ਕਿਉਂ ਇਹ ਜਾਗਦਾ ਰਿਹਾ ਮੈਂ ਸਮਝਾਂ ਨਹੀਂ ਸਤਿਗੁਰਜਾਤ ਜੀ ਹਾਂ ਜੀ ਸਤਿਗੁਰਜਾ ਜਾਂਦੀ ਰਹਣੀ ਉਹਨੀਆਂ ਮੈਂ ਤੁਹਾਨੂੰ ਸੁਦੀ ਪਰ ਸੱਜਾ ਗੰਤਾ ਹਾਂ ਤਾਂ ਨਮਸਕਾਰ ਰਹਣੂ ਜਦ ਰਾਕੇ ਸੇ ਸਵਾਲ ਲੈ ਰੇ ਕਰੀ ਹਾਂ ਨਮਸਕਾਰ ਜਮਾ ਜੋ ਨਮਸਕਾਰ ਉਹ ਵੀ ਬੋਏ ਕਹੋਤੇ ਹੈ ਬਵੇਕ ਪੂਰੀ ਤੱਕ ਪਚਾਉਣ ਵਾਲਾ ਹੈ ਸਾਰੀ ਉਹ ਜੂਡੋ ਜਲਦਾ ਰਿਹਾ ਹੈ ਮੈਂ ਝੋਕੇ ਕੱਟਿਆ ਮੈਂ ਅਤਾ ਸਭਰ ਝੋਕੇ ਕੱਟਿਆ ਤੇ ਜਾਕੇ ਸਟਿਆ ਸਾਰੇ ਸਭਰ ਜਾਕੇ ਸਟਿਆ ਹੂੰ ਉਹ ਦੋ ਟੋਖ ਲਾਈ ਹੋਈ ਆ ਲੰਮੇ ਦੇ ਵੀ ਦਰਫੜਾ ਉਹਦੀ ਜੀਵਨ ਦਾ ਸਾਨੂੰ ਪਤਾ ਹੀ ਨਹੀਂ ਇਹ ਉਹ ਵਿਚਾਰ ਆ ਸੱਚ ਤੇ ਸੇਰੂ ਸਤ ਸਤ ਸਤ ਪਰਮ ਸੋ ਤੋਈ ਸਤਿਪੁਰਖ ਤੇ ਕੋਈ ਨਹੀਂ ਇਹ ਸਿਰੂ ਕਿਹਾ ਹੋਇਆ ਉਹ ਜਾਗਰੂ ਹੋਣਾ ਚਾਹੀਦਾ ਅਸੱਚ ਆਪਣਾ ਅਪਰਿਅਯ ਦਾ ਵੱਡਾ ਵੀ ਹੈ ਫੱਖੇ ਇਧਰੋਂ ਇਧਰੇ ਪਾਸੇ ਵੇਖ ਰਹਾ ਤਾਂ ਫਾਕਾ ਇਹ ਚక్తి ਆ ਬੇਲੇ ਕੋਈ ਨਹੀਂ ਪਰ ਇਹ ਨੂੰ ਆਪਣੀ ਉਹ ਪਛਾਣ ਨਹੀਂ ਆਤਮਿਕ ਆ ਨਹੀਂ ਆਤਮ ਗਿਆਨ ਹੈ ਨਹੀਂ ਆਤਮ ਗਿਆਨ ਹੈ ਸਭ ਕੁਝ ਹੈ ਜਦ ਆਤਮ ਗਿਆਨ ਵੀ ਇੱਥੇ ਸੀਧੀ ਤੇ ਪਹੁੰਚਿਆ ਫਿਰ ਕੀ ਕਹਦਾ ਦੇ ਜਾ ਇੱਥੇ ਆ ਕੇ ਸੁਣ ਲਿਖਿਆ ਨਾ ਲਿਖਿਆ ਨਾ ਸੋਈ ਮੁੜ ਕੇ ਤੂੰ ਆ ਜਾ ਕੋ ਪ੍ਰਤਖੋਰ ਇਹ ਤੋਂ ਮਰੀ ਜੇ ਤੇ ਇਹ ਰਗਾ ਦੇ ਸੁ ਖਤਮ ਹੋ ਗਈ ਰਗਾ ਤੇਰੇ ਆ ਦੇ ਕੀ ਨੇ ਕੋਝਣਾ ਸੀ ਤੂ ਕੋਝਣਾ ਕੀ ਡੱਬਣਾ ਤੇ ਕਿਹਨੂੰ ਜਪਣਾ ਕੌਣ ਗੁਰੂ ਹੈ ਤੇ ਕੌਣ ਜਿੱਲ੍ਹਾ ਸਵੇ ਕੰਨਾ ਬਹਾ ਬਹਾ ਉਹ ਆਪੇ ਕਰੋ ਹੋਰ ਜੇ ਗੁਰੂ ਕਹਿੰਦਾ ਜੀ ਨੂੰ ਉਹ ਵੀਦਾ ਹੈ ਬਰੋ ਇਹਨੇ ਉੱਥੇ ਚਲੇ ਗਏ ਨੇ ਵੀ ਹੋਈ ਗਈ ਉਹਨਾਂ ਨੇ ਜਾਣੇ ਸਤੇ ਸੀ ਜੇ ਜਿਹਨਾਂ ਛੋਟੂ ਗੁਰੂ ਜਾਣਦੇ ਉਹ ਆਪੇ ਸ਼ਬਦ ਗੁਰੂ ਹੀ ਹੈ ਕਿਉਂਕਿ ਜੇ ਜਾਣਿਆ ਸੋਚੀ ਸੀ ਜੇ ਸੋਚੀ ਸੀ ਜੇ ਜੇਦੋਂ ਗੁਰੂ ਜਾਣਿਆ ਗੁਰੂਏ ਬਣ ਜਾਂਦਾ ਫਿਰੇ ਨਹੀਂ ਜਦ ਤਰਵ ਰੂਪੀ RAM ਹੈ ਰੂਪੀ RAM ਉਹ ਦਰਬਾਰ ਹੈ ਨਹੀਂ ਵੀ ਹੈ ਪਰ ਰੂਪੀ RAM ਹੈ RAM ਇਸ ਵਕਤ ਤਰਵ ਰੂਪੀ ਹੈ ਸਰਵ ਰੂਪੀਓ ਰੰਗ ਦਾ ਰਾਮ ਸਵਾ ਦਾ ਰਾਮ ਬੋਲਦਾ ਜਾਂ ਬੋਲਦਾ ਤਾਂ ਸਰਵ ਰੂਪੀਓ ਜਾਗਦਾ ਬੋਲਦਾ ਸੁਤਾ ਫਿਆਦੀ ਬੋਲਦਾ ਸੁਤਾ ਫਿਆ ਬਰ ਰੋਣਾ ਨਾ ਬੋਲਦਾ ਜੀ ਜਿਹਨੂੰ ਅੱਖਾਂ ਤੋਂ ਦਿਂਦਾ ਦੀ ਹੈ ਜੇ ਉਹ ਦੇਖਦਾ ਸਾਰਿਆਂ ਨੂੰ ਉਹ ਵੇਖੇ ਉਹਨਾਂ ਨਜ਼ਰ ਨਾਲ ਬਹੁਤ ਔਬੀ ਇਸੇ ਵਸਤੇ ਜੇ ਮਿਲਦਾ ਨਹੀਂ ਤਾਂ ਜਾਗਦਾ ਨਹੀਂ ਦਿਲ ਆ ਸਾਰਾ ਸਤ ਜਾਗਦਾ ਨਹੀਂ ਇਹ ਅੱਧੇ ਦੇ ਵਿੱਚ ਉਹ ਸਾਰੇ ਗੁਣ ਨੇ ਜਿਹੜੇ ਪਰਮੇਸ਼ਰ ਵਾਲੇ ਸੁਭੇ ਚਿੱਤ ਚ ਸਾਡ ਅਰੇ ਇੱਕ ਸਵਾਲ ਦੱਸ ਜਾਗਦਾ ਨਹੀਂ ਚਾਹੁੰਦਾ ਉਹ ਗੁਣ ਨੇ ਉਹ ਇੱਕ ਪਾਸੇ ਸੱਜਿਆ ਸਾਰੇ ਗੁਣ ਸਾਰੀ ਨੇ ਹੋ ਜਾਈਂ ਉਹ ਪੈ ਕੇ ਜੇ ਗੁਣ ਦੇ ਦੇਵੇਂ ਦਾ ਖੱਬੇ ਲਗਵਾ ਦਾ ਇਹ ਹੱਥ ਨੂੰ ਵਾਰਿਆ ਖੱਬੇ ਨੂੰ ਨਰਵੈਰ ਦੇ ਸੀ ਵਿਰੋਧ ਹੋ ਗਿਆ ਸੀ ਸ਼ਬਦ ਨਾਲ ਟੁੱਟ ਗਿਆ ਸੀ ਹੁਕਮ ਦਾ ਵਿਰੋਧ ਕਰਨ ਲੱਗਿਆ ਸੀ ਆਪਣੀ ਨੂੰ ਦੇ ਇੱਛਾ ਪੈਦੇ ਹੋਗੀ ਸੀ ਉਹਦੀ ਇੱਛਾ ਨਾਲ ਆਪਣੀ ਝਟਕਰਾ ਗਈ ਸੀ ਵਿਰੋਧ ਹੋ ਗਿਆ ਵਿਰੋਧ ਤੇ ਜਦ ਚੱਟ ਮਾਰੀਏ ਨਾ ਲੋਹੇ ਤੇ ਮਾਰੀ ਹੈ ਜੀ ਵਰਮਾ ਜੀ ਦਾ ਲੋਹੇ ਕੁਟੀਲੇ ਦਾ ਵਰਮਾ ਜੀ ਦਾ ਲੋਹੇ ਤੇ ਰੋ ਮਾਰੀਆ ਵਰਮਾ ਜੀ ਦਾ ਜੇ ਮੇ ਟਕਰਾਣਾ ਚਕਰਾ ਦੇ ਵਿੱਚ ਹੋ ਜਾ ਮਨਾਂ ਦੇ ਵਿੱਚ ਜਿੱਥੇ ਉਹ ਗੁੱਸਾ ਆਗੋ ਤਵੋਸ ਉਹ ਟਕਰਾਏ ਉਹਨਾਂ ਕੁਦਰਤੀ ਗੇ ਤੋਂ ਪਹਿਲਾਂ ਰੋਤ ਤੋਂ ਪਹਿਲਾਂ ਹੋਤ ਤੋਂ ਬਣ ਰੋਤ ਤੋਂ ਪਹਿਲਾਂ ਹੁੰਦਾ ਹੀ ਹੈ ਜਦੋਂ ਜਦੋਂ ਬਾਹਰ ਅੰਦਰ ਅਪਰਵਰ ਹੋ ਜਾਂਦੀ ਹੈ ਰੋਦਾ ਰੋਦੀ ਪੜਾਉਂਦੇ ਸੀ ਰੋਦੀ ਪੋਈ ਨਾ ਬੈ ਬਰੋ ਜਦ ਵੀ ਰੋਦਾ ਦਾ ਹੋਵੇ ਇਹ ਰੋਦਾ ਦਾ ਦਰਜ ਕਿ ਬਿੱਤੇ ਸਾਰੇ ਐਂਕਸ ਇਹ ਨਵੇਂ ਜੁਗਾਦਪੁਰ ਇਹ ਇਹ ਵੀ ਇਹੀ ਹੈ ਆਦੇ ਪਹਿਲਾਂ થી ਉਦੋਂ ਉਹ ਤੋਂ ਆਦ ਕਰਕੇ ਆਜ ਉਦੋਂ ਸੀ ਜਦੋਂ ਪਰਮੇਸ਼ਰ ਦੇ ਦਿਲ ਚ ਖਿਆਲ ਆਇਆ ਜਦੋਂ ਇੱਕ ਤ੍ਰਿਪੀਏ ਜਿਹਨੂੰ ਧੋਤੇੜਾ ਪਿਆ ਐ ਗਾ ਲੋ ਜਾਏ ਤੜਿਆ ਆਪੇ ਸੱਚ ਗਾ ਲੋ ਪੈ ਗਈ ਨਾ ਹੈ ਉਹਦਾ ਹੁਕਮ ਅਦਾ ਆਪਣਾ ਹੁਕਮ ਟਕਰਾ ਗਿਆ हां ज्यों तं वही गलदा है सोए रूपं का लेया है सर के आवाज नालों आधुलो ना ज्यादा है चुकाद कोरे ज्यादा है ज्यादा माया ਨਾਲ ਜੁੜ ਗਿਆ माया ਦੇ ਬਿਨਾ ਜੋਗ ਨਹੀਂ ਹੁੰਦਾ ਜੇ ਜਾਗਦਾ ਤਾਂ ਜੋਗਰ ਤੇ ਜਾਗਦਾ ਤਾਂ ਜੋਗਰ ਸਮੇਂ ਦਾ ਮਤਲਬ ਹੈ ਸਮੇਂ ਦਾ ਫਰਮਾਇਆ ਦੇ ਰੂਤ ਹੈ। ਹਾ ਜਦੋਂ ਜ਼ਰੀਰ ਹੈ ਨਹੀਂ ਤਾਂ ਜੋਗ ਨਹੀਂ ਹੈ। ਕੋਈ ਜੋ ਕਿਥੇ ਜਗ ਸੱਚੀ ਦੀ ਕੋਡਲੀ ਹੈਗੀ ਹੈ ਤਾਂ ਜੋ ਜੋ ਹੈਗਾ। ਕਾਲ ਹੈ ਦੇ ਨਾ ਤੇ ਲੱਗੂ ਹੈ। ਮਾਇਆ ਕਾਲ ਹੈ ਪਰ ਤਾਂ ਕਾਲ ਤੋਂ ਪਰੇ। ਹੂੰ। ਆਰ ਪਰੇ ਨਾ ਹੈ ਯਾਰ ਮਾਇਆ ਹੈ ਜੀ ਹੈ ਜੀ। ਫਿਰ ਸਾਚੇ ਤੇ ਜਦ ਪੋਗਣਾ ਤੇ ਹੈ। ਤੇ ਜਲ ਹੋਏ ਵਿਚ ਦੇ ਟਾਈਮ ਪਵਨਾ ਤਾਂ ਜਿਆਦਾ ਉਹਨੂੰ ਦਾ ਕੰਮ ਲੱਗਿਆ ਹੀ ਐ ਤੇ ਜਦ ਦਾ ਹੀ ਤੇਰੇ ਪਰ ਬਣ ਸਾਜਣ ਨੂੰ ਵਿਚਾਲ ਲੱਗਿਆ ਤੇ ਤੇਰੇ ਪਰ ਬਣ ਸਾਜਿਆ ਫਿਰ ਆਸਟ੍ਰੇਲੀਆ ਤੋਂ ਵੀ ਮਹਾਂ ਜਿਹੜੀ ਤੇਰੇ ਪਰ ਬਣਨੀ ਹੋ ਰਿਹਾ ਜਿਹੜਾ ਜਲ ਤੇ ਤੇਰੇ ਪਰ ਬਣ ਸਾਜਿਆ ਤੇਰੇ ਪਰ ਬਣਨੀ ਮਨ ਕਰੀ ਕ੍ਰੀਰ ਹੋਇਆ ਨਾ ਆਪਣੀ ਤਸੱਲੀ ਹੁੰਦੀ ਹੈ ਨਾ ਅਗਲੇ ਦੀ ਹੁੰਦੀ ਹੈ ਤੇ ਨਾ ਤੇਰੇ ਭਾਣ ਸਾਜਿਆ ਆਪਾਂ ਕਹਿੰਦੇ ਆ ਉਹ ਤਾਂ ਸਾਚੇ ਦੀ ਵੀ ਗੱਲ ਹੈ ਥੀਰ ਆ ਰਹੀ ਹੈ ਪਬਲਿਕ ਵੀ ਜਲਦੀ ਉਹ ਸਾਰੀ ਕਲੀਅਰ ਹੋ ਰਿਹਾ ਬੈਠਦੇ ਸਾਜਿਆ ਲਿਖਾਇਆ ਤੇਰੇ ਸਾਜਿਆ ਹੈ ਤੋਂ ਬੁਰਾਂ ਤੇਰੇ ਭਾਣ ਸਾਜਿਆ ਖੇਰ ਕੱਢ ਕੱਢ ਜੋਤ ਸੋਇਆ ਉਹ ਧਰਗੜ ਜੋ ਸੋਇਆ ਤੇ ਉਹ ਫੇਰ ਹੋ ਜਾਂਦੀ ਆ ਤਿੰਨ ਪਾ ਬੰਦੀ ਵਿੱਚ ਖੜੀ ਹੋ ਤੇ ਜਲ ਤੋਂ ਪ੍ਰਭਾਣ ਕਿਵੇਂ ਸੱਜੇ ਸਾਜੇ ਦਾ ਤੇ ਪ੍ਰਭਾਣ ਪਰ ਕੀ ਦੇ ਵੱਖਰੇ ਵੱਖਰੇ ਨੇ ਅੱਛਾ ਕਿਹਨੂੰ ਗਾਣਗੇ ਬਣ ਕੇ ਵੀ ਕਰਾ ਘਰ ਨੂੰ ਹਨ ਲੋਕੋ ਬਣਾ ਰਾਮ ਕਰਬਤ ਤੇ ਇਹਦੇ ਵਿੱਚ ਇਹ ਤੱਤ ਵੀ ਬਾਹਰ ਇਕਮਾ ਹੁੰਦਾ ਹੋਰ ਕੁ ਤੱਤਾਂ ਨਾਲ ਬਣਦਾ ਜੇ ਤੱਤੀ ਰਹਿੰਦੇ ਜਦੋਂ ਜੱਗ ਕੋਠਰੀ ਨਹੀਂ ਭਵਨ ਫਿਰ ਕੋਠਰੀ ਨਹੀਂ ਕੋਠਰੀ ਭਵਨ ਤੱਤ ਤਾਂ ਹੁੰਦਾ ਹੀ ਹੈ ਆਪਾਂ ਇਹਨਾਂ ਜੋਤੀ ਨਾਲ ਜੋੜਜਾਂ ਲਾਇਆ ਮਾਟੀ ਮਾਟੀ ਹੋਈ ਹੋਏ ਕਿਸੇ ਨਾਲ ਹੋ ਗਿਆ ਪਵਨ ਹੋ ਤੱਤ ਹੈਗੇ ਨੇ ਤੁਸੀਂ ਇਹਨਾਂ ਦੀ ਗਿਰਤੀ ਕਿਵੇਂ ਕਰੋਗੇ ਆ ਡੱਡ ਕੇ ਬਿਜੇ ਉਹ ਤੇ ਇੱਕ ਤੇ ਪੱਜੇ ਤਾਂ ਪਹਿਲਾਂ ਨੇ ਲੋ ਇੱਕ ਰਹੀ ਤੇ ਵੀ ਸਮੋ ਰਹੀ ਆ ਉੱਥੇ ਸਿਰ ਇਕੱਠੇ ਕਰਦਾ ਬਾਹਰ ਵੀ ਇਕੱਠੇ ਕਰਦੇ ਆਪਾਂ ਪਰ ਉੱਥੇ ਤਾਂ ਨਾਲ ਜੋਦ ਨਹੀਂ ਕੋਈ ਸੋਈ ਨਹੀਂ ਜਾ ਸਮੋਈ ਹੈ ਜਿਹੜੀ ਉਹ ਨਹੀਂ ਆ ਬ੍ਰਾ ਮੈਨੂੰ ਜੱਪਾ ਨੂੰ ਉਂਗਲੀ ਰੋਗਾ ਬਲਕਿ ਜੀਜਾ ਵੀ ਰਹਿੰਦਾ ਉੱਥੇ ਆਪਣੀ ਕਿਤੇ ਵੀ ਆ ਕੇ ਚੰਨ ਭਵਨਾਂ ਦੇ ਗੱਲ ਆਪਣੀ ਕਿਤੇ ਖੁੱਲੀ ਹੋਣੀ ਹੈਗੀ ਮੈਂ ਚੰਨ ਭਵਨ ਮਾਇਆ ਕਦੇ ਕਿਤੇ ਸੈਡੂ ਪਵਣ ਸੀਤੋ ਜੋਗ ਚਾਰ ਯੁਗ ਦਾ ਕਲੀਅਰ ਆ ਬੰਦੇ ਨੂੰ ਮੈਨੂੰ ਪਤਾ ਹੈ ਇਹ ਸਮੱਸਿਆ ਕੀ ਹੋਈ ਹੈ ਸੈਡੂ ਉਹ ਮਿਲ ਜਾ ਤੂੰ ਵਾਇਆ ਦੇ ਵਿੱਚੋਂ ਪਵਣ ਲਾ ਗਿਆ ਉਹ ਜਿਹੜਾ ਵਾਇਆ ਕਿਤੇ ਨਾਲ ਜੋਧ ਤਨ ਭਵਣ ਹੂੰ ਉਹ ਦੇਖ ਲੈ ਜੋਧ ਇੱਕ ਭਵਣ ਦਾ ਹੈ ਆਕਾਸ਼ ਚ ਹੈ ਜੋਧ ਤੇ ਆਕਾਸ਼ ਪਾਣੀ ਫਿਰ ਹਵਾ ਦਾ ਅਟਲ ਜੰਮਾ ਕਾਸ਼ਾ ਪਾਣੀ ਵਾਲੀ ਉਹਦਾ ਜੋਤ ਵੀ ਹੈ ਕਿ ਪੰਜੇ ਸੱਤ ਵੀ ਨੇ ਪਰ ਮਿਕਸ ਨਹੀਂ ਹੈਗੇ ਅੱਛਾ ਠੀਕ ਹੈ ਮਿਕਸ ਹੀ ਹੈ ਜੋਤ ਵੀ ਲੱਗਿਆ ਤੇ ਤੱਤ ਵੀ ਲੱਗਦੇ ਸੱਤ ਚਾਰ ਲੱਗਦੇ ਕੁਦਰ ਹਾਂ ਹਾਂ ਚਾਰ ਲੱਗਦੇ ਕਾਜ ਨਾਲ ਕਾਜ ਨਾਲ ਜੋਤਾ ਜਿੱਦਾਂ ਪੜ੍ਹਨ ਤੱਤ ਕਰ ਲੈ ਚਾਰ ਅੱਜ ਸਾਡੇ ਜੋਤ ਕਾਜ ਨਾਲ ਲੋਕ ਵੀ ਕਲੀਅਰ ਹੋਏ ਹੋਏ ਨੇ ਤੇ ਨੇ ਜੁਗ ਵਿਚਾਰੇ ਹੋਏ ਹੋ ਗਿਆ ਕਿ ਨਹੀਂ ਜੇ ਆਏ ਹੁੰਦੇ ਆ ਚਲੋ ਨਹੀਂ ਆਏ ਇਸ ਤਰੀਕੇ ਹੋਏ ਹੁਣ ਨਾ ਨਹੀਂ ਤੇ ਜੋ ਉੱਪਰ ਤੇ ਇਹ ਭੌਣੇ ਨਹੀਂ ਉਹ ਤਾਂ ਜੁਗ ਹੋਗੇ ਨਾ ਫੋਟਾ ਹੀ ਆ ਰਗਾ ਨਹੀਂ ਉਹ ਤਾਂ ਠੀਕ ਕਰਦੇ ਚਲੋ ਬ੍ਰੀਕੀ ਦੇ ਕੋਲ ਪਹੁੰਚਦੇ ਤੇਰੋ ਆ ਗੱਲ ਕੜੀ ਪਊਗੀ ਜਿਹੜੀ ਹੁਣ ਮਾਇਆ ਵਾਲੇ ਘਰ ਤੇ ਮਾਇਆ ਦੇ ਗਿਆਨ ਨੇ ਸਰਦਾਰਾ ਭਵਨ ਹਾਂ ਇੱਕ ਤਾਂ ਮਾਇਆ ਦੇ ਭਵਨ ਇੱਕ ਤਾਂ ਮਟੀਰੀਅਲ ਹੈ ਭਵਨਾਂ ਦੇ ਬਣਿਆ ਜੀ ਹਾਂ ਮਟੀਰੀਅਲ ਹੈ ਸੀਨੇ ਭਵਨ ਨੇ ਮਿਸਤਰੀ ਵੀ ਅੱਡੇ ਬੈਠਾ ਹੈ ਵੀ ਅੱਡੇ ਬੈਠਾ ਹੈ ਮਟੀਰੀਅਲ ਅੱਡੇ ਤੇ ਹੈ ਜ਼ਾਇਆ ਜੀ ਗੇ ਆ ਦੂਜੇ ਵੀ ਸੱਜੇ ਧਰਮ ਵੀ ਹੈਗਾ ਇਹ ਲੱਗ ਲੱਗ ਹੋਏ ਪਏ ਨੇ ਪਰਾਠੇ ਵੀ ਪਏ ਹੈ ਹਾਂ ਵਜੀਰੇ ਵੀ ਪਏ ਹੈ ਬਣਾਉਣ ਵਾਲਾ ਵੀ ਹੈ ਜੋ ਇਕੱਠਾ ਨਿਕਲਣ ਗਿਆ ਉਹ ਪਾਉਣਾ ਹੋਏ ਪਏ ਹਾਂ ਆਉਂ ਨੂੰ ਮਿਲਿਆ ਨਹੀਂ ਮਿਲਿਆ ਇਹ ਕੋਲ ਨੂੰ ਹੈਗਾ ਲਾ ਕੇ ਜੋ ਬਸਰੀ ਬਣਾਉਣ ਵਾਲਾ ਕੋਈ ਆਇਆ ਪਰਾਠ ਹੈਗਾ ਕੁਝ ਤਾਂ ਬਾਜ਼ਾਰ ਚ ਬਿਠੇ ਪਿਆ ਮੈਂ ਮਾਰਕਰ ਵੀ ਲੈ ਕੇ ਰੱਖਿਆ ਕੋਈ ਗੱਲ ਨਹੀਂ ਪਰ ਉਹ ਨੂੰਹਲਾਣਾ ਤਾਂ ਉਹ ਬਰਮਣਾੜਾ ਉਹ ਘਬਰਾੜੂ ਜੇ ਢੜਿਆ ਗੜ ਗੜਿਆ ਸੋ ਗੜਨੇ ਭਾਵੇਂ ਆਪਣੇ ਵਾਸਤੇ ਹੀ ਆਪਣੇ ਵਾਸਤੇ ਕਿਸੇ ਵਾਸਤੇ ਨਹੀਂ ਬਣੋੜਾ ਹੈਗਾ ਦੁਆਦ ਹੁਣ ਜੁਆਦ ਗੁਰੇ ਪੜਨਾ ਹੈ ਹਾਂ ਆਦੂਰਦਾ ਜਿਆਦਾ ਨਾ ਜਿਆਦਾ ਜੋ ਉਹ 5 10 ਬੱਧੀ ਬਣੇ ਆ ਜਿਹੜਾ ਉਹ ਕੋਈ ਤਾਂ ਗੁਰੂ ਕਾ ਆ ਗਿਆ ਪਰ ਹੋਰ ਤਰ੍ਹਾਂ ਬਣਦਾ ਸੀ ਸ਼ਲੋਕ ਗੁਰੂ ਹੀ ਆ ਗਿਆ ਹੋਰ ਤੋਈ ਹੈ ਗੁਰੂ ਹੀ ਆਊਗਾ ਆਜ ਜਗਾ ਜਗਾ ਚ ਹੀ ਪੋਜੀਸ਼ਨ ਹੈ ਇੱਕੋ ਹੀ ਆ ਫਿਰੋ ਆਦੂਰਦਾ ਨਾ ਜੁਬਾਦ ਕੋਰ ਨਾ ਆਜੂਆ ਇਹ ਆਜੂਆ ਦੀ ਹੁੰਦਾ ਆ ਹਾਂ ਇਹ ਵਨਾਸ਼ੀ ਹੁੰਦਾ ਹੈ ਇਹ ਰਾਸ਼ੀ ਹੁੰਦਾ ਹੈ ਹੂੰ ਉਹਨੇ ਫੇਰ ਕੀਆ ਸਤਗੁਰੇ ਨੂੰ ਸਤਗੁਰੇ ਨੂੰ ਹੂੰ ਉਹ ਲੋ ਨੇ ਆਇਆ ਸਤਗੁਰੇ ਇਹਨੂੰ ਹੁਣ ਦੇਣਾ ਸਤ ਲੱਗ ਗਿਆ ਇਹ ਨਾ ਫਿਰ ਜਦ ਅੱਗੇ ਗਿਆ ਜਾਵੇ ਅੱਗੇ ਕੀਆ ਜੁਗਤੋ ਭੇ ਹਾਂ ਫਿਰ ਸਤੁਰ ਬਾਅਦ ਇਹ ਕੀ ਨਮਸਕਾਰ ਹੈ ਗੁਰੂ ਜੀ ਦਾ ਉਸਨੂੰ ਨਮਸਕਾਰ ਕਰਦੇ ਹਾਂ ਹਜ਼ੂਰ ਜੜ ਦੂਜੇ ਲੱਕੜ ਬੈਸੇ ਮੰਗਾਰੇ ਇੱਥੇ ਤਾਂ ਪਵਤਰੀ ਹੈ ਸਤਿਗੁਰੂ ਇਹ ਨਮਨ ਹਮ ਸਤਿਗੁਰੂ ਉਹ ਖਾਲੀ ਕੋਈ ਨਹੀਂ ਵੀ ਇਹ ਨਹੀਂ ਮੰਨਿਆ ਕਿਉਂ ਨਾ ਇਹ ਗੁਰੂ ਨੇ ਸਤਿਗੁਰੂ ਪ੍ਰਮੋਟ ਹੋ ਕੇ ਹੋਣਾ ਨਹੀਂ ਆਉਂਦਾ ਇਹ ਸਾਇੰਸ ਦੀ ਗੱਲ ਤਾਂ ਸੁਣੀਓ ਸੱਚੀ ਹੈ। ਅੰਤਰਾ ਤੋਂ ਨੇ ਵਾਟਾ ਕੋਈ ਹੋਜੀ ਹੁਜੀਓ। ਤੇ ਜਾਰੇ ਇਹੀ ਕਹਿ ਬਈ ਇਹੀ ਸਤਗੁਰ ਹੈ। ਇਹੀ ਸਤਗੁਰ ਹੈ ਇਹਨੂੰ ਜਗਾਰ। ਬ੍ਰਹਮ ਜੀ ਕੋਲ ਤਾਂ ਨਾਲ ਸਤਗੁਰ ਹੈ ਫਿਰ ਬਗਾੜ ਦਾ ਗੱਲ ਹੋਏ। ਤਾਂ ਦਾੜੀ ਨਾਲ ਹੈ। ਆਪੇ ਸਤਗੁਰ ਸੱਚ ਦੇ ਖੜਾ। ਸ਼ੈਤਾਨ ਹੈ ਮਰਜੀ ਸੱਚ ਦੇ ਖੜੋ ਤੇ ਹਟਾਉਂਦਾ ਸੱਚ ਦੇ ਗਾਣੂ। ਖੜਦਾ। ਕਾਲੇ ਖਰਜਾਂ ਦੇ ਦੇ ਜੀ ਕਰਦਾ ਮੋਟਾ ਇਹਦਾ ਹੀ ਹੈ ਜੋ ਕੋਈ ਮਾਰ ਜਾਏ ਮਾਰ ਨਹੀਂ ਇਹਦੇ ਨਾਲ ਲੱਗੂਗਾ ਕਾਲ ਮਰਦਾ ਕਿਹਾ ਵੀ ਚਾਹੇ ਤੂੰ ਆਪਣੇ ਬਾਣੀ ਚੱਲਦਾ ਫਿਰ ਬੇਛੇ ਛੋਟਾ ਹਾਲ ਜੇ ਗੁਰਕੇ ਪੜ੍ਹਨ ਚੱਲੇਗਾ ਤੇ ਬਸ ਚੱਲੇਗਾ ਜੇ ਵਿੱਚ ਬੋਤ ਬਿਠਾਏ ਜੀ ਕਿਹਾ ਹੈ ਨਾ ਉਸ ਕੀ ਕਾਲ ਕੁਝ ਵੀ ਇਹਦਾ ਆਪਣਾ ਮਨੇ ਰਹਿੰਦਾ ਆਪੇ ਡੋਲਦਾ ਹੈ ਜਾਂ ਡੋਲਦਾ ਕਿਧਰ ਗਿਆ ਲੋਰਡ ਆਪਣਾ ਵਾਧਲਾ ਨਾ ਵੜਿਆ ਨਾ ਕੋਈ ਵੀਰ ਲੈ ਜਾਦੇ ਐਡੀ ਵੱਡੀ ਚੀਜ਼ ਨੂੰ ਕੋਈ ਵੀਰ ਲੈ ਗਵਾ ਦਿੰਦਾ ਐਡੀ ਵੱਡੀ ਹਸਰ ਨੂੰ ਕੋਈ ਵੀਰ ਲੈ ਗਵਾ ਬੜਾ ਥਾਲ ਤਦ ਜਾਨ ਰੁਕ ਜਾਂਦਾ ਉਹ ਵਦਦਾ ਅੱਗੇ ਵਦਦਾ ਰੁਕੇ ਤਾਂ ਇਹ ਜਾਨ ਨਾ ਤੇ ਲੰਬ ਧਰਮ ਨਾ ਬਲੰਬ ਦੱਲ ਇੱਥੇ ਆ ਕੇ ਕੀ ਆਇਆ ਫਿਰਨ ਬਾਦਸ਼ਾਹ ਦਾ ਨਾ ਬਲੰਬ ਧਰਮ ਧਰਮ ਕਰਨ ਲੱਗੇ ਸਲਾਹ ਨਾ ਕਰਨ ਲੱਗੇ ਜਿਹੜਾ ਸਲਾਹ ਕਰਨ ਨਾ ਗੱਡੀ ਆ ਗਈ ਥੋੜੀ ਦੇਰ ਖੰਨਾ ਸਲਾਹ ਜਿਹੜਾ ਕਰ ਰਿਹਾ ਜਨ ਉਹਨਾਂ ਦਾੜ ਫੜਦੀ ਬਲੰਬ பாਪਮ ਤਰਨ ਤੋਂ ਬੇਮਖੋੜ ਲੱਗੇ ਹੋ ਉਦੋਂ ਤੱਕ ਬਲੰਬ ਕਰੋ ਔਰ ਉਹ ਦੇਲੇ ਕਰੋ ਜਿਹਨਾਂ ਉਹ ਦਾ ਡਿਲੇ ਕਰੋ ਜਹਾਂ ਐਸੇ ਰੋ ਗੱਡੀ ਐਸੇ ਆਈ ਆਈ ਸਰਦ ਐਸਾ ਜਾਂਦੇ ਹਾਂ ਉੱਥੀ ਗੱਡੀ ਚੱਲ ਲੱਗੇ ਹਾਂ ਉੱਥੇ ਪਾੜ ਇੱਥੇ ਖੜੇ ਰਹਤੋ ਚੜੋ ਗੱਡੀ ਇੱਧਰ ਆਈ ਐਸੇ ਲੰਘ ਜਾਓ ਹਾਂ ਸਬਰ ਆਜੀ ਉੱਥੀ ਉੱਥੇ ਚੜ ਜਾ ਪਾਪੂ ਰਾਮ ਕਬੀਰ ਕੀ ਗਾਨਾ ਬਸ ਕੋਈ ਮਨ ਮਿਲਦਾ ਬਲ ਮਹਾਵ ਬਸ ਕੋਈ ਬਲੰਬ ਕਰੇ ਹੋਏ ਮਨ ਮਿਲਦਾ ਹੋਵੇ ਜਿਨੇ ਬਰਮ ਕਰਿਆ ਉਹ ਗਿਆ ਉਹ ਪਰ ਫਜ਼ੂਕਾ ਪਹਾੜ ਤੋਂ ਖੈ ਇਹ ਗੀਤ ਮਨ ਕੇ ਕਿਸੇ ਇੰਗੋ ਤੋਂ ਗੱਲ ਗਈ ਹੈ ਵੀ ਜੇ ਮਨ ਮਿਲਦਾ ਹੋਵੇ ਕਿਸੇ ਵੇਲੇ ਜਦੋਂ ਮਨ ਮਿਲਦਾ ਮਨ ਜਗੇ ਮਰ ਜਾਂਦਾ ਬਿਲ ਨਹੀਂ ਬੱਸ ਨਾ ਅਦਾ ਬਿਲ ਨਹੀਂ ਬੱਸ ਨਾ ਕਿ ਕੋਈ ਆਵੇ ਦੋਸਤਾਂ ਨਾਲ ਦੀ ਮੱਤ ਕੋਈ ਮਨ ਮਿਲਦਾ ਦਿਲ ਮਾਵਾ ਇਹ ਸਮਰਪੜ ਦੀ ਗੱਲ ਹੈ ਇੱਥੇ ਤਨ ਮਨ ਤਨ ਸਭ ਸੰਗਲ ਕੋ ਉਹ ਕਬੂਨੇ ਨਾ ਇਹ ਹੈ ਉਹ ਤੇ ਬੁੱਧੀ ਤੇ ਫਿਲਮ ਨਹੀਂ ਆਈ। ਧਾਨਕ ਨੇ ਜਾਇਦਾਦ ਸਾਰੀ ਆਪਣੀ ਆਪਣੇ ਮੁੰਡਿਆਂ ਨੂੰ ਦਿੱਤੀ। ਇੱਥੇ ਨਾ। ਧਨਾਂ ਨੂੰ ਦਿੱਤਾ। ਹੂੰ। ਕੰਗਸਾ ਮਾਇਆ ਖਤਰੇ ਮਿਲ ਕੋ ਆਇਆ ਨਹੀਂ ਮਾਇਆ ਬਿਲਕੁਲ ਨੇ ਜੇਰੂੜੀ ਕੋ ਜੋ ਉਹ ਬੁੱਧੀ ਸੀ ਜੈਨੀ ਹੋ। ਉਹ ਉਹ ਇਹਨਾਂ ਪਰ ਰਹਿਣ ਦੇ। ਜੇ ਜਿਹੜਾ ਜਹਾਜ਼ ਤੁਰਲਾ ਜਾ ਉਹ ਆਇਆ ਕਿ ਕਿ ਜਾਇਦਾਦਾਂ ਦੇ ਮਤੇ ਆ ਗਿਆ ਉਹ ਬੜਾ ਨੇੜੇ ਦਾ ਪਰ ਉਹ ਥੱਲੇ ਕਰਨਾ ਆਇਆ ਜੇ ਜਿਹੜੀ ਆਪਣੀ ਜਾਇਦਾਦ ਹੁੰਦੀ ਹੈ ਕੋਈ ਜ਼ਰੂਰੀ ਨਹੀਂ ਹੈ ਉਹ ਅਸੀਂ ਕਿਸੇ ਸੰਸਥਾal ਨੂੰ ਦੇ ਦੇਣੀ ਹੈ ਕਿਉਂਕਿ ਆਪਣੀ ਜਾਇਦਾਦ ਨਹੀਂ ਹੁੰਦੀ ਹੈ ਆਪਣਾ ਤਾਂ ਗੁੱਝੂ ਦੀ ਹੁੰਦੀ ਹੈ ਜੇ ਆਪਾ ਕਹਨੇ ਮੇਰਾ ਹੈ ਇਹ ਤਾਂ ਫਿਰ ਗਰੂਪ ਦੇ ਖਿਲਾਫ ਹੈ ਜਬਰਤ ਦੇ ਖਿਲਾਫ ਹੈ ਨਾ ਮੇਰਾ ਮੁਝ ਵਿੱਚ ਕੁਝ ਨਹੀਂ ਤੇਰਾ ਸੰਤ ਟੱਪੜਾ ਮੇਰਾ ਹਰ ਕੋ ਕੀ ਫੜ ਕਰੇਂਦਾ ਫਿਰ ਉੱਥੇ ਨਹੀਂ ਇਹ ਉਹਨਾਂ ਜੇ ਤੁਸੀਂ ਹੋਰ ਕੁਝ ਮਾਮਵਾੜੀ ਨਹੀਂ ਕਰਦੇ ਤਾਂ ਨਹੀਂ ਉਹਨਾਂ ਦੇ ਤੁਸੀਂ ਉਹਨਾਂ ਦੀ ਨਰਾਜ਼ਗੀ ਲੈ ਕੇ ਕੋਈ ਚੀਜ਼ ਤੋਂ ਹਾਂ ਬਾਅਦ ਇਹ ਦੱਸਦੇ ਕਿ ਜਦੋਂ ਤੁਸੀਂ ਕੱਟ ਗੱਲ ਤੁਹਾਨੂੰ ਕਿ ਲੋੜ ਹੈ ਗੱਲ ਇਹ ਹੋ ਰਹੀ ਰਾਜੀ ਹੋ ਜੀ ਵੀ ਲੋਗ ਗਏ ਤੇ ਉਹ ਆਪਣਾ ਦਾ ਆਪ ਆਉਣ ਕਰੋ ਦੇਖੋ ਅਸੀਂ ਕੋ ਕੋ ਪਰਸਾ ਮਸਾਲਾ ਨਹੀਂ ਆ ਆਪ ਆਏ ਜੀ ਆਪਣਾ ਜੀਵਨ ਬਸ ਚੱਲਦਾ। ਕਦਰੋਂ ਆਪਣੇ ਜੀਵਨ ਦੀ ਲੋੜ ਹੁੰਦੀ ਹੈ। ਮਾਇਆ ਦੀ ਲੋੜ ਨਹੀਂ ਹੁੰਦੀ। ਬੰਦਾ ਚਾਹੀਦਾ। ਉਹ ਬੰਦਾ ਚਾਹੀਦਾ ਆਪਣੇ ਜੀਵਨ ਚਾਹੀਦਾ ਬਸ ਉਹਨੂੰ ਵੱਡਾ ਬੰਦਾ ਚਾਹੀਦਾ ਔਰ ਬੰਦਾ ਜੀਵਨ ਚਾਹੀਦਾ। ਇਹ ਸਭ ਕੁਝ ਜੀਵਨ ਦਾ। ਮਾਇਆ ਦਾ ਤਾਂ ਖੇਤੀ ਜਿੱਤਣ ਦੀ ਲੋੜ ਨਹੀਂ। ਮਾਇਆ ਦੀ। ਮਾਇਆ ਦੀ ਗੱਲ। ਜੇ ਜੀਵਨ ਨਾਲ ਜੇ ਬੰਦਾ ਚੱਲਦਾ ਜੀਵਨ ਚੱਲੂਗਾ ਬਸ। ਜੋ ਜੀਵਨ ਆਇਆ ਜਨਾਜੇ ਜੀਵਨ ਵਾਲੇ ਸੀਗੇ ਚੱਲਦਾ ਜਾ ਤੁਹਾਨੂੰ ਜਦ ਤੱਕ ਉਹ ਹੀ ਆ ਗਏ ਹੋ ਜਦੋਂ ਅਜਿਹਾ ਜੇ ਦੇ ਜੀਵਨ ਦੇ ਵਾਸਤੇ ਕੀਤਾ ਕੀਤਾ ਗਿਆਨ ਹੈ ਜੀ ਦਾ ਫਿਰ ਕੋਈ ਉੱਤੋਂ ਤੋਂ ਸਮਰਪਿਤ ਜਾਂਦਾ ਹੈ ਉਹ ਨਾ ਇਹ ਫੋੜ ਕੇ ਜਾਨ ਕੀ ਕੀਤਾ ਨਾਨਕ ਆਪਸੇ ਬੜ੍ਹਤੇ ਨਾਨਕ ਜੀ ਆਪਣੇ ਘਰਾਂ ਤੋਂ ਬੁੱਝੇ ਰਿਆ ਮਹਿਰਾਤਾ ਬਦਲਦੀ ਲੈਣ ਨੂੰ ਸਫੇਤੋ ਖੰਡਾਲ ਤੋਂ ਆ ਗਿਆ ਨਨ ਇੱਥੇ ਆ ਗਿਆ ਕੋਈ ਬਾਦ ਗੁਰੂ ਸਾਹਿਬ ਆ ਗਿਆ ਗੁਰੂ ਸੀ ਉੱਥੇ ਕੋਈ ਦਸੇ ਜਾਦੀ ਸੀ ਕੋਈ ਜਾਣ ਪਛਾਣ ਵਾਲਾ ਸੰਬੰਧ ਦਾ ਉਹਨਰ ਸੀ ਉੱਥੇ ਬਹਿ ਗਏ ਉਹਨਾਂ ਨੇ ਸਭ ਨਹੀਂ ਆਉਂਦੇ ਸੀ ਜੇ ਦੂਸਰ ਕਥੇ ਜਾਇਆ ਕਰਨਾ ਤੁਹਾਡੇ ਕੋ ਉਹ ਤਾਂ ਆਪ ਸੀਗੇ ਇਦਨਲੇ ਬੁਖਸਰ ਕੋਲ ਦੇ ਲੋਕ ਕੋਲ ਆ ਰਹੇ ਜਿੱਦ ਗਾੜੇ ਕੋਈ ਨਹੀਂ ਸੁਣਾਂਗਾ ਸਰ ਜੀ ਪਰ ਜਾਨਾ ਬਰਾੜਾ ਦਾ ਤੇ ਲੈਣੇ ਵਾ ਕੀ ਤਰ੍ਹਾਂ ਦਾ ਨਾਲੇ ਜਨਵੇਂ ਲਾਂਗੇ ਦੀ ਤਰ੍ਹਾਂ ਉਹ ਗੁਜ਼ਾਰਾ ਬੜਨਾ ਉਸ ਬੁਖਸਰ ਰੋਡ ਤੇ ਜਾਂਦੇ ਕਿ ਬਰਾੜਾ ਬੁਖਸਰ ਰੋਡ ਤੇ ਗੁਜ਼ਾਰਾ ਆ ਗੁਰੂ ਇਹ ਨਵੇਂ ਗੁਰੂ ਆਦ ਗੁਰੇ ਨਵੇਂ ਸਤਿਗੁਰੇ ਨਵੇਂ ਸਤਿਗੁਰੇ ਇਹ ਨਵੇਂ ਗੁਰੂ ਜੀ ਗੁਰੂ ਦੇਵ ਇਹ ਜੀ ਗੁਰਦੇਵ ਨਾਨਕ ਹੋਟੇਲਾ ਜੀ ਗੁਰਦੇਵ ਇਕਨਾਂ ਗੁਰਦੇਵ ਗੁਰਦੇਵ ਜੀ ਗੁਰਦੇਵ ਵਿੱਚ ਜੀ ਗੁਰਦੇਵ ਜੀ ਹੈਗਾ ਜਿਹੜੇ ਗੁਰਦੇਵ ਉਹਦੇ ਵਿੱਚ ਉਹਨਾਂ ਚ ਸਭ ਤੋਂ ਜਿਹੜਾ ਸ੍ਰੇਸ਼ਟ ਉਹ ਜੀ ਗੁਰਦੇਵੋ ਜਾਣੀ ਉਹ ਸਤਿਗੁਰੇ ਹੁੰਦਾ ਸਤਿਗੁਰ ਬਿਜ ਜਾਣਾ ਸਾਹਿਬ ਜੀ ਬਸ ਸਾਨੂੰ ਐਥੇ ਜਿਹੜੇ ਨੂੰ ਪੁੱਛਿਆ ਆਪਾਂ ਨਮਸਕਾਰ ਹੋ ਰਹੀ ਹੈ ਆਪਣੇ ਹਮਝਣ ਨੂੰ ਤੇ ਵੀ ਕਰਨਾ ਕਿ ਸ੍ਰੀ ਗੁਰਦੇਵ ਜੀ ਨੇ ਅੰਮੇ ਜੀ ਇੱਥੇ ਹੁਣ ਆਪਾਂ ਕਹਾਗੇ ਉੱਥੇ ਤਾਂ ਕੀ ਐਥੇ ਵੀ ਲੈਣ ਨੂੰ ਆਪਾਂ ਗੁਰਾਂ ਮੇਰੇ ਨੂੰ ਨਮਸਕਾਰ ਕਰਦਾ ਕਹਿ ਰਹੇ ਨੇ ਬੁਖਾਰ ਨਹੀਂ ਹੈ ਸਿੱਖ ਗੁਰਦੇਵ ਆਪਣੇ ਆਪ ਨੂੰ ਵਿਦੇਸ ਕਰਦਾ ਹੈ ਆਪਣੇ ਆਪ ਨੂੰ ਕਰਕੇ ਉਹ ਬਾਹਰ ਲੈ ਦਿੰਦਾ ਆਪ ਜਪਾ ਬਰਾ ਨਾਮ ਦੀ ਬਾਜ਼ਾਏ ਆਪ ਜੁਵੇ ਅੰਦਰ ਚੱਲ ਰਿਹਾ ਆਪਣੇ ਸਮਝਾ ਰਿਹਾ ਫਿਰ ਸਿੱਖ ਗੁਰਦੇਵ ਨਾ ਸਤਿਗੁਰੇ ਨਾਮ ਕਿਸੇ ਨੂੰ ਸਮਝਾ ਰਿਹਾ ਗੁਰ ਸਿੱਖ ਗੁਰਦੇਵ ਫਿਰ ਤੁਝਾਂ ਨੂੰ ਵੀ ਸਾਰੇ ਫਿਰ ਉਹ ਆਪਣਾ ਨਾਮ ਦੱਸੋ ਅਗਰ ਆਪ ਦੇ ਕੋਈ ਆਪਣਾ ਨਾਮ ਹੈ ਨਾਮ ਮਾਨੀ ਕੁਮਾਰ ਬਦਲਦੀ ਹੋਈ ਸ੍ਰੀ ਗੁਰੂ ਦੇਵ ਜੀ ਨਮਸਕਾਰ ਵੀ ਦੇ ਸੁਪ ਸਾਚ ਜਿਹੜੇ ਵਾਲੇ ਉਹਨਾਂ ਨੂੰ ਫਕਟ ਗੁਰੂ ਮਟਾ ਨਹੀਂ ਗੁਰੂ ਸੁਭੀ ਕੇ ਨਹੀਂ ਵਰਤਿਆ ਹੋਇਆ ਕਿਉਂਕਿ ਗੁਰੂ ਦਾ ਆਪਣੀ ਇਲਾਮ ਰੋਣਾ ਨਾਲ ਨਹੀਂ ਕਿਤੇ ਮੁਝ ਕੋ ਹੋਰ ਬਤਾਨੇ ਕੋ ਗੁਰੂ ਨੇ ਸ੍ਰੀ ਗੁਰ ਗੁਰਦੇਵ ਕਹਤਾ ਗੁਰੂ ਫੇਰ ਉੱਡੀ ਗਿਆ ਸ੍ਰੀ ਗੁਰਦੇਵ ਇਹਨਾਂ ਸ੍ਰੀ ਗੁਰਦੇਵ ਕਹਤਾ ਸ੍ਰੀ ਲਾਤਾ ਨਾਲ ਚੌਥੀ ਸੇ ਲੱਗਿਆ ਸ੍ਰੀ ਗੁਰਦੇਵ ਦੇ ਲੇਕਿਨ ਗੁਰੂ ਫਿਰੋਜ ਜੀ ਦਾ ਸ੍ਰੀ ਗੁਰਦੇਵ ਤੋਂ ਵੱਡੀ ਕੋਈ ਸਟੇਜ ਹੈ ਜੀ ਸ੍ਰੀ ਗੁਰਦੇਵ ਗੁਰੂ ਨੇ ਗਾ ਰਹੇ ਜੀ ਗੁਰਦੇਵ ਗੁਰਦੇਵ ਹੋਰ ਵੀ ਜਾਨ ਦੇਣ ਵਾਲੇ ਇਸ ਸ੍ਰੀ ਗੁਰਦੇਵ ਗੁਰਦੇਵ ਦਾ ਸਾਰੇ ਫੀਲਡ ਜੇ ਹੈਗੇ ਨੇ ਸਾਰੇ ਫੀਲਡ ਜੇ ਸ੍ਰੀ ਗੁਰੂ ਗੱਲ ਨਾ ਕਿ ਕੋਈ ਸਾਬੀ ਕੇ ਹੋਵੇ ਗੁਰੂ ਦਾ ਕੋਲ ਲੈ ਕੇ ਲੇਵਗਾ ਦੇ ਨੇ ਵੀ ਨੇ ਠੀਕ ਹੈ ਜੀ ਡਰਾਈਵਰਾਂ ਨੇ ਵੀ ਨੇ ਸਾਰੇ ਗੁਰੂ ਬਣੇ ਤੇ ਇਹ ਚਲੋ ਉਹ ਦੇ ਤਰਫ ਸਾਰੀਆਂ ਮਤਾਂ ਦੇ ਸਾਰੀਆਂ ਮਤਾਂ ਦੇ ਵਿੱਚ ਜਾਨਵਾਨ ਆਦਮੀ ਦੇ ਸਾਰੇ ਨੇ ਆਪਣੇ ਆਪਣੇ ਗੁਰੂਆ ਗੁਰਦੇ ਬਣਾਏ ਹੋਏ ਨੇ ਉਹ ਚਲ ਗੁਰੂ ਕਹਿੰਦੇ ਜਦੋਂ ਗੁਰੂ ਪਤਾ ਜੀ ਦੱਸਦਾ ਕਹੀ ਜਾਂਦੇ ਨੇ ਉਹ ਗੁਰੂ ਸਭ ਤੋਂ ਵੱਡਾ ਲੱਭਦਾ ਹੈ ਕਿ ਉਹਨਾਂ ਨੇ ਰੱਖਵਾ ਆਪਣੇ ਕਰਤ ਪਰ ਕਰਿਆ ਸਭ ਤੋਂ ਵੱਡਾ ਕੋਈ ਹੋਈ ਨਹੀਂ ਇਹਦਾ ਖਾਤਾ ਹੁੰਦਾ ਹੈ ਇਹ ਤੋਂ ਵੱਡਾ ਕੋਈ ਹੋਈ ਨਹੀਂ ਹੈ ਹੀ ਅਸਿਨਾਂ ਗੁਰੂ ਗੁਰੂ ਤਾਂ ਸਾਰਿਆਂ ਅੰ ਦੇ ਵਿੱਚ ਕਿਸੇ ਨੇ ਕੋਈ ਸਤਿਗੁਰੂ ਬਣਾ ਕੇ ਨਹੀਂ ਕੋਈ ਬਣਾਇਆ ਹੁਣ ਤੱਕ ਗੁਰੂ ਵੀ ਹੈ ਪ੍ਰਕਾਰ ਦੀ ਤਾਂ ਕੋਈ ਗ੍ਰਹਿਤੀ ਹੋਣੀ ਕਿਸੇ ਚੀਜ਼ ਦੇ ਪਰਕਾਰ ਦੀ ਗੁਰੂ ਨਹੀਂ ਜਿਹੜੇ ਗੁਰਦੇ ਸੱਚ ਫਰਮਾਇਆ ਉਹ ਜਿਹੜੀ ਗੁਰਦੇ ਨੇ ਹਾਂ ਜਿਹੜੇ ਗੁਰ ਨੇ ਸੱਚ ਸੱਚ ਫਰਮਾਇਆ ਹਾਂ ਸੱਚ ਉਹ ਗੁਰਦੇ ਨੇ ਜਿਹਦੇ ਸੱਚ ਤੋਂ ਹੀ ਬਾਣੀ ਲਿਖੀ ਉਹ ਜਿਹੜੇ ਸੱਚ ਗੁਰਦੇ